ਰਾਮ ਛੇਪ ਨਿਵਾਹੀ ਬਹੁਤ ਲਾਭ ਘਰ ਆਏ ਪਤਵੰਤ ਪਿੱਛੇ ਤੇ ਪੜ੍ਹੋ ਖਰੀ ਕਿਰਪਾ ਜਿਹੜੀ ਖਰੀ ਕਿਰਪਾ ਠਾਗਰ ਪਈ ਇਤੋਂ ਆਨੰਦ ਸੁਖ ਵਿਸਰਾਉ ਖਰੀ ਕਿਰਪਾ ਠਾਗਰ ਪਈ ਖਰੀ ਕਿਰਪਾ ਉਹਦਾ ਸੱਚੀ ਕਿਰਪਾ ਜੀ ਰੋਜ਼ ਸੱਚਾ ਕਹਨੋ ਪੁਰਖਰਾ ਕਹਨੋ यार भी सच्चा है या खराय कोई है खरे खजाने पाए सच्चे खजाने पर <coughs> खरा दे खोटा दो दूजा हां खोटा खोटा झूठा है खरा सच्चा है खरी कृपा ठाकुर पर ठाकुर दी कृपा खरी के हो ਠਾਕਰ ਜੋ ਕਿਰਪਾ ਕਰ ਦਵੇ ਕੋਈ ਰੋਕ ਨਹੀਂ ਸਕਦਾ ਉਹ ਹੋ ਜਾਂਦਾ ਕਿਸੇ ਦੀ ਉਹ ਬਹਾਜ ਦੀ ਕੋਈ ਉਹਨੂੰ ਰੋਕ ਨਹੀਂ ਸਕਦਾ ਕਿਉਂਕਿ ਜੋ ਠਾਕਰ ਚੂਰਾ ਹੋ ਜਾਂਦਾ ਕੋਈ ਰੁਕਾਵਟ ਨਹੀਂ ਇਸ ਕਰਕੇ ਖਰੀਦ ਲੈਂਦਾ ਆਦਿਤੀ ਕਿਰਪਾ ਖਰੀਦ ਕਰਵਾਉਂਦੇ ਆਜੂ ਪਹਿਲਾਂ ਤੋਂ ਕਿਰਪਾ ਕਰ ਸਕਦੇ ਜੀ ਵਿਚਾਰ ਅਰਬੀ ਦੀ ਕਿਰਪਾ ਦਾ ਤਾਂ ਹੈ ਜੇ ਪਰਮੇਸ਼ਰ ਦੀ ਕਿਰਪਾ ਵੀ ਪੂਰੀ ਹੋਵੇ ਜਿਹੜੀ ਇਹ ਕਰੇ ਜੇ ਕੋਈ ਆਦਮੀ ਅਰਦਾਸ ਕਰ ਦਿੰਦਾ ਹੈ ਉਹਦੀ ਅਰਦਾਸ ਪੂਰੀ ਹੋ ਜਾਂਦੀ ਅਸਲ 'ਚ ਉਹਦੀ ਕੀਤੀ ਅਰਦਾਸ ਵੀ ਪੂਰੀ ਹੋਈ ਹੋਣਾ ਹੀ ਹੋਣਾ ਉਸ ਉਹਦੀਆਂ ਪੰਜਾਂ ਅਰਦਾਸਾਂ ਪੂਰੀਆਂ ਹੋ ਗਈਆਂ 95 ਪੂਰੀਆਂ ਨਹੀਂ ਹੋਈਆਂ ਨੇ ਪਚਲੂਏ ਪੂਰੀਆਂ ਨਹੀਂ ਹੋਈਆਂ ਉਥੇ ਪਰਮੇਸ਼ਰ ਸਾਹਿਬ ਤੇ ਨਹੀਂ ਜੁਰਾ ਲੜਦਾ ਕੋਈ ਅਰਦਾਸ ਤੋੜੀ ਹੋਈ ਹੈ ਜਿਹੜੀ ਉਹਨੇ ਪੂਰੀਆਂ ਕਰੀਆਂ ਆਲ ਸੀ ਇਹ ਗੱਲ ਅਲੱਗ ਹੈ ਉਹਨੇ ਵੀ ਉਸੇ ਰੇਡੀਓ ਦਾ ਅਸਰ ਤੁਹਾਨੂੰ ਨੇ ਬਾਹਰ ਬਟੇਰੀ ਵਾਲੀ ਗੱਲ ਆ ਸੀ ਤੇ ਇਹਦੇ ਦੇ ਪਰ ਵੀ ਇਸ ਉਸਾਰੀ ਦੇ ਸੰਸਾਰੀ ਜੀ ਜਿਹੜੇ ਆਪਣੇ ਆਪ ਕਹਿੰਦੇ ਜੂ ਸਾ ਸੰਤ ਬਣੇ ਕਰਦੇ ਨੇ ਮੈਂ ਦੀ ਹਸਤੀ ਵਾਲੇ ਇਹ ਇਥੇ ਐਸਾ ਨਹੀਂ ਇਹਨਾਂ ਦੀ ਕੋਈ ਅਰਦਾਸ ਨਹੀਂ ਹੋਈ ਉਹ ਜਿਹੜੀ ਜਾਂਦੀ ਅਰਦਾਸ ਉਹ 100 100 ਉਹ ਕਿੜਾ ਪਾ ਨਾ ਮਾਰੇ ਜੋ ਕਹੇ ਮੈਂ ਮਾਰਿਆ ਉਹ ਬਿਲਕੁਲ ਗੱਲ ਤਾਂ ਇਹਦਾ 100 ਤੇ ਖਲਾਇ ਦੋਏ ਕਿਉਂ ਲਗੇ ਠੰਡੇ ਵਿੱਚ ਚੋੜੀ ਲਗੇ ਹਰਵੇ ਤਾਂ ਨਹੀਂ ਮਾਰੇ ਕੀ ਇਹ ਸੋਚ ਕੇ ਨਹੀਂ ਤੇ ਮਾਰੇ ਮਾਰੇ ਸਾਰੇ ਤਾਂ ਉਹਨੇ ਫੜ ਕੇ ਮਾਰਿਆ ਉੱਥੇ ਰਾਜ ਉਹਦਾ ਫੜ ਕੇ ਮਾਰਿਆ ਫਿਰ ਜਿਹੜਾ ਸਹੀ ਲੱਗਿਆ ਅਸੀਂ ਤਾਂ ਸਾਰੇ ਮਾਰੇ ਨੇਾਰੇ ਮਾਰੇ ਆਦਮੀ ਗੋਲੀ ਚਲਾਉਂਦਾ ਉਹ ਤੇ ਲੱਗਦੀ ਨਹੀਂ ਕਿਸੇ ਦੇ ਬੜੀ ਕੋਹੇਟ ਕਰਦਾ ਭਾਈ ਚਾਹ ਗੋਲੀ ਸਾਦੇ ਚ ਗਈ ਝਾੜੋ ਉਹ ਜਾਈ ਮਰ ਕੇ ਜਿੱਦੜੇ ਵਿੱਚ ਕਿਸੇ ਜਾਨਵਰ ਤੇ ਗੋਲੀ ਚਲਾਉਂਦੀ ਹੈ ਪਰ ਕੋਈ ਉਹ ਤੇ ਬਦਦਾ ਲਕਰ ਮਕਰ ਮੜਦਾ ਸਦਾ ਤੇ ਸਰਕੜੇ ਦੇ 부ਜੇ ਸੀ ਅੱਜ ਕੱਲ੍ਹ ਦਾ ਕੁੜਵੀ ਹੈਗਾ ਕਿਤੇ ਉਹ ਲੈ ਜਾ ਜੀ ਸੀ ਉਹ ਗੁਰ ਤੇ ਕਰੀ ਉਹ ਜਰੇ ਦੇ ਵਿੱਚੋਂ ਕੋਈ ਮਰਗਮਰ ਕੋਠਿਆ ਕੋਸ਼ਕਾਰ ਉਠਿਆ ਉਹਨੇ ਗੋਲੀ ਚਲਾਤੀ ਉਹਦੇ ਤੇ ਲੱਗੀ ਉਹ ਗਾਲਲੇ ਉਹਦੇ ਤੇ ਮਾਰੀ ਉਹ ਨਹੀਂ ਕਿਤੇ ਇਹਦੇ ਮਾਰੀ ਉਹਦੇ ਲੱਗੀ ਨਹੀਂ ਇਹ ਨਹੀਂ ਮਾਰੀ ਉਹ ਲੱਗੀ ਪੂਰਾ ਦੇਖਿਆ ਅਸ ਉਹਦੇ ਵਾਰ ਨੂੰ ਆਦੇ ਕਰਾਈ ਸੀ ਜਿਹੜਾ ਪਠਾਇਆ ਸੀ ਲੋ ਨੇ ਗਿਆ ਸਰਪ ਨੂੰ ਹਾਂ ਨਾਂ ਘਰ ਆਏ ਭਗਵੰਤ ਪਤਵੰਤ ਖੇਵਨਵਾਹੀ ਬਹੁਤ ਲਾਭ ਬਹੁਤ ਲਾਭ ਘਰ ਆਏ ਜਿਹੜੀ ਥੇਪ ਲੈ ਕੇ ਗਿਆ ਸੀ ਜਿਹੜਾ ਸੌਦਾ ਦਰਗਾਹ ਦੇ ਵਿੱਚ ਲੈ ਕੇ ਚੱਲਿਆ ਸੀ ਲੱਦ ਕੇ ਸਾਰੀ ਪਾਸ ਹੋ ਗਿਆ ਸੌਦਾ ਹੋ ਗਿਆ ਸਾਰਾ ਕੋਈ ਸੌਦਾ ਵਿੱਚ ਐਸਾ ਨਹੀਂ ਹੈ ਜਿਹੜਾ ਰਜੈਕਟ ਹੋ तो फेरो ਦਾ ਲਾਭ ਤਾਂ ਆਲੋਚ ਬਹੁਤ ਲਾਭ ਜੇ ਜਿੰਨਾ ਗਿਆਨ ਅਸੀਂ ਲਿਆ ਹੈ ਉਹ ਸਹੀ ਹੋਵੇ ਜਿੰਨਾ ਜਪ ਕੀਤਾ ਸਹੀ ਕੀਤਾ ਹੋਵੇ ਜਿੰਨਾ ਤਪ ਕੀਤਾ ਉਹ ਸਹੀ ਹੋਵੇ ਜਿੰਨਾ ਨਾਮ ਜਪਿਆ ਦਰਗਾਹ ਸਾਰਾ ਪ੍ਰਵਾਨ ਹੋ ਜਵੇ ਸਾਡੇ ਸਾਰੇ ਤਰਫ ਤੇ ਗੰਭ ਪ੍ਰਵਾਨ ਹੋ ਜਾਣ ਜੋ ਕੁਝ ਅਸੀਂ ਸੰਸਾਰ ਦੀ ਸਾਰੀ ਦੌਲਤ ਨੂੰ ਹਜ਼ਰਾ। ਫਿਰ ਰਤਨ ਬਣ ਜਾਂਦਾ ਹੈ ਇਹ ਕੌਡੀ ਹੈ ਸਾਰਾ ਸੰਸਾਰ ਇਹ ਤਾਂ ਕੌਡੀ ਹੈ। ਮਿਲਦਾ ਹੈ ਰਤਨ। ਜਿਵੇਂ ਰਤਨ আর ਕੌਡੀ ਦੀ ਕੀਮਤ ਦਾ ਫਰਕ ਹੈ। ਇਹ ਦੋ ਫਰਕ ਬਹੁਤ ਰਹਾ ਬਹੁਤ 다르 ਤੇ। ਜਿਵੇਂ ਕੋਈ ਰਤਨ আর ਕੌਡੀ ਹੈ। ਦੋਹਾਂ ਦੀ ਕੀਮਤਾਂ ਜਿਹਾ ਫਰਕ ਹੈ। ਬਹੁਤ 라ਬ ਬਹੁਤ 라ਬ ਕੇ ਬਨਵਾਹੀ ਬਹੁਤ 라ਬ ਘਰ ਆਏ ਬਦਲ ਤੇ ਜੋ ਅਸੀਂ ਕੀਤਾ ਸਾਰਾ ਧਰਬ ਦੇ ਰੋਤੇ ਸਹੀ ਅਰਜਵੇ ਦਾ ਹੱਦਗਾ ਤੇ ਬਤਾਉ ਹੋਵੇ ਮੁਰਬਾਨੀ ਅੰਸਾਰ ਹੋਵੇ ਇਹ ਤਾਂ ਇਹ ਮੁਰਬਾਨੀ ਦੇ ਅੰਸਾਰ ਤਾਂ ਕਿ ਬਿਬੜੀ ਜੀ ਕੋਤਰ ਹੋ ਜਾਣ ਜਾ ਕੇ ਜਿਪਰ ਰਿਜੈਕਟ ਹੋ ਜੇ ਐਤੋਂ ਪੇਤਾ ਕੋਈ ਬਾਹਰ ਸਬਜ਼ੀਆਂ ਭੇਜਤੀਓ ਚਲੀਆਂ ਗਈਆਂ ਉਹ ਵਾਲੇ ਬੁਰਕੀ ਉਹਨਾਂ ਨੇ ਕੀਤੀ ਟੈਸਟ ਉਹ ਕਹਿੰਦੇ ਨਾ ਇਹਦਾ 17% ਜਾ ਰਿਹਾ ਹੈ ਕੰਮ ਬੋਰਡ ਨੂੰ ਵਾਪਸ ਹੋੜ ਜਾਣ ਦਾ ਖਰਾਇ ਵੀ ਪੈ ਗਿਆ ਸਭ ਜੀ ਆਉਂਦੀ ਸੜ ਵੀ ਗਈ ਬੜਾ ਲਾਹ ਹੋਇਆ ਕੀਮਤ ਦੇਣੀ ਪਈ ਵੀ ਕਰਾਇਆ ਹੋਰ ਉਹਦੇ ਪੈ ਗਿਆ ਇਹ ਨਾ ਮੈਂ ਤਰਬੂਜ ਸੋਵੇਂ ਨਵੇਂ ਸੀ ਬਪਾਰੀ ਉੱਤੇ ਡੇੜੇ ਦੇ ਪਿੰਡ ਦੇ ਬਜ਼ੁਰਗ ਕਹਿੰਦੇ ਉਹ ਤਰੂਝ ਲਗੇ ਲੈ ਕੇ ਆ ਗਏ ਸਮਾੜੇ ਉਹ ਆਪਣੇ ਪਟਿਆਰੇ ਕੋਲ ਸਮਾੜੇ ਪੈਂਦਾ ਸੀ 20 ਛੜੀ ਲੱਗੀ ਹੋਈ ਸੀ ਉਸ ਦਾ ਬਦਲ ਜੇ ਸੀ ਕਿ ਜਦੋਂ ਏਟੋ ਪਰੇ ਕੇ ਲਿਆ ਕਰਦਾ ਤਾਂ ਧੀ ਪਈ ਗਿਆ ਦੋ ਦਿਨ ਦੋ ਦਿਨ ਸਮਾੜੇ ਬੈਠੇ ਰਹੇ ਗੱਡੀ ਵਾਲਾ ਵੀ ਉੱਥੇ ਸਮਾੜਣ ਆ ਕਹਿੰਦਾ ਲੈ ਜਾ ਉੱਥੇ 20 ਦੀ ਹੈ ਗੱਲ ਬਟੱਡੇ ਪਹੁੰਚੇ ਸੋਲੇ ਦਾ ਘਰ ਨੂੰ ਜਾਣਾ ਜਾਂ ਛੜੀ ਲੱਗ ਜਾਂਦੀ ਆ ਉਹ ਕਿਹਾ ਸੀ ਉਹ ਨਾ ਪਰਸੋਂ ਵੀ ਬਟੱਡੇ ਸੁੱਕਾ ਪਰਸੋਂ ਤਾਂ ਸੁੱਕਾ ਹੀ ਤਰਬੂਜ ਘਟਦੇ ਨੇ ਕਰਾਇਆ ਵਧ ਗਿਆ ਉਹ ਆਪਣੇ ਜੱਸ ਕੇ ਗੱਡੀ ਛੱਡ ਕੇ ਗੱਡੀ ਤਾਂ ਤਰਬੂਜ ਛੱਡ ਕੇ ਗਸ ਗਿਆ ਹੈ ਜਿਹਨੇ ਪੈਸੇ ਵਟਣੇ ਕਰਾਇਆ ਬੰਦ ਹੋ ਗਿਆ ਉਹ ਦਿਲੋਂ ਦਾਪੇ ਹੋ ਗਿਆ ਇਹਦਾ ਸਿਆਣੇ ਗੜੇ ਕੇ ਆ ਗਏ ਨੇ ਕੱਪੜੇ ਵੀ ਕਿੜੀ ਜੁੜੀਓ ਵੇਚੀ ਖੜਾ ਗੜਾ ਛੁੱਟਦਾ ਜੇ ਉਹ ਕਹਾਂ ਸੌਦਾ ਬਕੇ ਲੈਕਟ ਹੋ ਜੇ ਕਮਜ਼ੋਰ ਹੋਵੇ ਫੋਟਾ ਹੋਵੇ ਨਾ ਜੋ ਦਿਆ ਆ ਪੈਸੇ ਉਹ ਵੀ ਗਏ ਲਾਵ ਤਾਂ ਜੇ ਸਹੀ ਹੋਵੇ ਜੋ ਆਪਾਂ ਸੋਚ ਕੇ ਚਲੇ ਸੀ ਹੋਵੇ ਉੱਥੇ ਮਸੂਮ ਹੋਈ ਜਾਈ ਤੇ ਜਾਂ ਇਹੀ ਹੈ ਪੈਸੇ ਨਹੀਂ ਕਿ ਲੈਂਦੇ ਨੇ ਆ ਤੇ ਫੜਿਆ ਜਾਵੇ ਫੇ ਜੇੜਾ ਫਿਰ ਵੀ ਪੈਸੇ ਲਗਾਏ ਗਏ ਖਰਾਤਲਾ ਸਾ ਗੁਰਦਿਆ ਆਇਆ ਜੀਰੇ ਭਗਵਾਨ ਖਰਾਤਲਾ ਸਾ ਗੁਰਦਿਆ ਉਹ ਸਤਵੰਨ ਵੀ ਖਰਾਇਤਲਾ ਸਾ ਦੱਸਦਾ ਸੱਚਾ ਦੱਸ ਕੇ ਜੇ ਤੇਰੀ ਖੇਬ ਬਾਰਡਰ ਪਾਸ ਕਰ ਜੇ ਖੇ ਪਾਸ ਬਾਡਰ ਤੇ ਦਲੀਜਾਂ ਦਾ ਤੇ ਪਾਸ ਕਰਦੀਆਂ ਖੇ ਪੇ ਚੈੱਕ ਪੋਸਟ ਖਤਰੀ ਜਾਂਦਾ ਸਤਗੁਰ ਨੇ ਖਰਾ ਅਦਲਾਸਾ ਦਿੱਤਾ ਸੀ ਕਿ ਜੇ ਤੇਰੀ ਦੇ ਵਿੱਚ ਇੱਕ ਵੀ ਚੀਜ਼ ਰਿਜੈਕਟਡ ਨਿਕਲੀ ਨਾ ਪੂਰੀ ਗੇਪਾਸ ਆਪ ਲੈ ਆਪ ਆਵੇਂ ਮਿਲੇ ਲੈ ਕੇ ਫਿਰ ਬਾਰਡਰ ਤੋਂ ਆਪ ਲੈਣ ਆਊਗਾ ਸੰਤੋਖੀ ਨੂੰ ਫਿਰ ਉੱਥੇ ਨਾਮ ਬਦਲਵਾਊਗਾ ਨਾਮ ਆਪ ਲੈ ਕੇ ਜਾਊਗਾ ਨਾਵ ਉੱਥੇ ਪ੍ਰਗਟ ਹੋਊਗਾ ਜਿ세 ਤੂੰ ਬੈਠਾ ਹੈ ਉੱਥੋਂ ਆਪ ਲੈ ਕੇ ਜਾਊਗਾ ਜੇ ਨਾ ਬਮਾਨਾ ਲੈਣ ਵਾਈ ਗੱਲ ਹੈ ਜਿਹੜਾ ਮੈਂ ਪਹਿਲਾਂ ਸਵਾਲ ਕੀਤਾ ਸੀ ਉਹਦਾ ਜਵਾਬ ਹੈ ਉਹਦਾ ਫੇਰ ਉੱਥੇ ਜਿੱਥੇ ਸਮਾਨ ਹੋ ਰਿਹਾ ਹੈ ਐ ਨਹੀਂ ਵੀ ਨਵੀਂ ਦਾ ਬੋਰਡ ਜਾਂ ਬੇਟਰੀ ਦਾ ਫੇਰ ਉਹ ਆਪ ਭਗਵੰਤ ਲੈਣ ਆਉ ਉੱਥੇ ਲਸੀ ਕਰਕੇ ਉੱਥੋਂ ਲੈ ਕੇ ਜਾਉ ਆ ਆਣ ਬਿਲੇ ਆਏ ਮਿਲੇ ਭਗਵਾਨ ਆਏ ਬਿਲੇ ਭਗਵਾਨ ਭਗਵਾਨ ਉੱਥੇ ਆਪ ਆ ਕੇ ਮਿਲਿਆ ਆਪ ਤਰੀਕ ਤੇ ਆਪਦਰ ਸਰ ਕੋ ਉਹ ਆਪਣੂ ਸੁਭਾਨੀ ਚੇਤ ਕਰਾ ਆਪਣੀ ਖੇਪੇ ਚੇਤ ਕਰਾ ਇਹ ਗੱਲ ਕਹੀ ਸੀ ਖਰਾ ਦਲਾਸਾ ਗੁਰਦਿਆ ਗੁਰਦਿਆ ਇਹ ਕੀ ਕਾਜੀ ਵੀ ਜਿੱਥੇ ਤੇਰੀ ਖੇਅ ਕਹੂਗੀ ਜਿੱਥੇ ਸਾਰਾ ਕੁਝ ਇੱਕ ਖੋ ਉਹ ਜਗ੍ਹਾ ਤੇ ਬਿਨਾਂ ਸਭ ਕੁਝ ਬੋਲਣ ਅੱਗੇ ਨਾਮ ਤੇ ਬਿਨਾਂ ਕੁਝ ਨਿਕਲੇ ਆਈ ਨਹੀਂ ਵਿੱਚੋਂ ਨਾਮ ਤੇ ਬਿਨਾਂ ਨਿਕਲੇ ਕੁਝ ਨਹੀਂ ਵਿੱਚੋਂ ਖੇਅ ਖੇਅ ਬਿਦਵਾਈ ਨਾਉਂਦੋ ਜੇ ਸੰਗਤਨ ਨਾਮਦੋ ਨੂੰ ਜਾਣਾ ਹੀ ਨਹੀਂ ਹੋਵੇ ਅਬਜੋ ਬਣਾ ਝੜੇ ਦੀ ਪਰ ਫੋਕ ਕਿਉਂ ਹੋਰ ਪਦਰਵਤ ਲਦਰ ਵਿੱਚ ਕਿਉਂ ਕਿਉਂ ਇਨਹਾਜ਼ਲਦਰ ਵਿੱਚ ਜੋ ਤੁਸੀਂ ਹੋਰ ਕੁਛ ਵੀ ਵਿੱਚ ਪਾਉਗੇ ਕਿ ਆਦੀ ਆਹੋ ਦਲ ਰਿਜੈਕਟਡ ਹੈ ਉਹ ਉਹ ਕਿਉਂਕਿ ਲੋੜ ਕਿਉਂ ਜੇ ਕੌਮ ਸੀ ਜਿਹੜੀ ਗਾਹਾਂ ਕੁਛ ਵੀ ਨਹੀਂ ਪਾ ਸਕਦਾ ਤੁਸੀਂ ਜੋ ਪਾਉਂਗੇ ਉਹਨੇ ਅੜਾੜਾ ਦਾ ਜਨਾਕ ਇਹਦੇ ਵਿੱਚੋਂ ਕਾੜਾ ਲੈਣੀ ਪड़ੂਗੀ ਬਹੁਤ ਜੁਕਤਾਂ ਅੰਤਰ ਨਾਲ ਨੂੰ ਪਰਮ ਬਣਾਉਣ ਦੇ ਨਾਲ ਬਹੁਤ ਸਾਰੇ ਗੁਣਤਾਲ ਗ੍ਰਾਹਕਾਰੀ ਦੀ ਸੋਝਾ ਨਹੀਂ ਸੋਝੀ ਨਹੀਂ ਆ ਸਕਦੀ ਅੱਗੇ ਦੀ ਜ਼ਰਤ ਲੱਗੋ ਆਪਾਂ ਕਰਦੇ ਅੱਗੇ ਦੀ ਆਣ ਬਲੇ ਭਗਵੰਤਾਂ ਦੀ ਗੱਲ ਹੀ ਉਹ ਤਾਂ ਨਾਨਕ ਦੀ ਗੱਲ ਕਰਦੇ ਨੇ ਉਹ ਜਰਨਲ ਕਰ ਸ਼ੁਰੂ ਕਰ ਬਸ ਤੂੰ ਪਿੱਛੇ ਪੜੂ ਤੇ ਆਪਰੇ ਪੜੂ ਤੇ ਤੈਨੂੰ ਮੱਝਲੇ ਨਹੀਂ ਸਰ ਦਰਸ਼ਨਾਂਤ ਦੇ ਨਿਕਲ ਕਰ ਉਹ ਬਸ ਉਹ ਜੀ ਦੀ ਜਿਹੜੀ ਆਪਣੇ ਉੱਤੇ ਬੋਲ ਮਤਲਬ ਪਿੱਛੇ ਪੜ ਗਏ ਤੂੰ ਮਤਲਬ ਉਹ ਤਾਂ ਨਹੀਂ ਆਉਗਾ ਬਾਰੇ ਲੈ ਲੈਣਾ ਬਸ ਅੱਡੇ ਹੋ ਗਏਲਾ ਮਾਵਾ ਆਈ ਮਲੇ ਤਾਂ ਹਾਂ ਆਪਾਂ ਕਰਦੇ ਭਗਵਾਨ ਤੇ ਭਗਵਾਨ ਦੀ ਨੂੰ ਕਰਦੇ ਹਾਂ ਆਈ ਮਲੇ ਹਾਂ ਮਤਲਬ ਜਹਾ ਦੇ ਆਈ ਮਲੇ ਭਗਵਾਨ ਉਹ ਵੀ ਭਗਵਾਨ ਤੇ ਵੀ ਭਗਵਾਨ ਕਿਉਂ ਹੁੰਦੇ ਪਿੱਕੇ ਹੁੰਦੇ ਦੋਰੀ ਹੋਰ ਹੈ ਸਾਰਾ ਸ਼ਹਿਰ ਆਪਣੇ ਲੋਕਾਂ ਨੂੰ ਤਰਸਲ ਸ਼ਬਦ ਸਭਾਵ ਹੈ ਅਵਾਦ ਜਿਹੜਾ ਸ਼ਬਦ ਆਏ ਮੇਰੇ ਕੋਮੰਡਰਾਂ ਨੇ ਬਲੇ ਕੋਈ ਦੇ ਨਹੀਂ ਸ਼ਾਬਦ ਜਿਸ ਵਾਰ ਹੋਣੇ ਸਾਰੇ ਭਗਵੰਤੇ ਨੇ ਭਗਵੰਤੇ ਕਵਚਨ ਨਹੀਂ ਹੈ ਆਏ ਮੇਰੇ ਕੋਮੰਡਰ ਕਵਚਨ ਨਹੀਂ ਜਿਤੇ ਸ਼ਬਦ ਪਰ ਹੋਏ ਨੋ ਮਿਲੇ ਜਿਹੜਾ ਸਾਰੇ ਸਮਾਇਦੇਾਰੇ ਸਾਚੇ ਭਰ ਇੱਕ ਆਠਵਚਕ ਇੱਕੇ ਜਿਵੇਂ ਇੱਕੇ ਆਇਆ ਤਾਂ ਉਹ ਮੈਂ ਤਾਂ ਕਹਿ ਦਿੱਤੀ ਫਿਰ ਤਾਂ ਕਹਿ ਦਿੱਤੀ ਫਿਰ ਘਰ ਬੈਠੋ ਹਰਜਨ ਪਿਆਰੇ ਜਿਹੜਾ ਪ੍ਰਵੇਸ਼ ਕਰਾਇਆ ਸੱਚ ਖਣ ਦੇ ਵਿੱਚ ਬਾਰਡਰ ਕ੍ਰਾਸ ਕਰਾਇਆ ਸਾਰਿਆਂ ਦੀ ਰਾਇਵਲ ਨਹੀਂ ਹੁਕਮ ਕਰਾ ਦਉਂਦਾ ਕੱਪ ਕਮ ਹੁੰਦਾ ਉਹਦੇ ਤੋਂ ਹੁੰਦਾ ਸਾਰਾ ਜਿਹੜੀ ਕਰਾਇਆ ਉਹੀ ਪਰਹੁੰਦਾ ਉਹ ਹੁਣ ਤੱਕ ਤੇ ਦੋ ਹੋ ਗਏ ਅਸਤ ਇੱਕ ਕਣ ਕਾ ਪਕਹਦੇ ਹਨ ਕਣਕ ਪੌਦੇ ਦਾ ਰੂਪ ਕਣਕ ਬੀਜ ਦਾ ਰੂਪ ਉਹ ਜਿਹੜਾ ਭਗਵਾਨਤਾ ਪੰਡਾ ਤੇ ਬੀਜ ਦਾ ਰੂਪ ਹੈ ਜਰੂਰ ਜੇਕਰ ਬੇਰੋਜ਼ਗਾਰ ਨੋਮਨ ਤਾਂ ਇੱਕ ਜੁਪਾ ਜਦ ਕੋਈ ਕਾ ਬੀਗਾ ਖਾਣ ਚ ਇੱਕ ਦਾਬ ਖਾਣ ਵਾਲਾ ਹੈ ਚਾਹੇ ਉਹਦਾ 1000 ਰੁਪਏ ਕੱਚਾ 1000 ਰੁਪਏ ਜੁਦ ਖਾਣੇ ਹੀ ਹੈ ਇਹ ਕੱਬ ਦਾ ਬੂਤਾ ਹੈ ਤੋ ਹਰ ਲੋ ਬਗੈਰੇ ਮੈਂਨ ਤੋ ਬਲਦੀ ਰੋ ਹਲੂ ਕਹਿੰਦੇ ਭੁੜਿਆਣੇ ਨੂੰ ਦਿਖਾਈ ਗਏ ਕਹਿੰਦੇ ਆ ਵੀ ਆਪਾਂ 1000 ਮੂਟਾ ਐ ਵੀ ਆਮਾ ਨਾ ਮੂਟਾ ਕੋਈ ਉਹ ਤਾਂ ਹਜਾਰਾਂ ਆਪ ਲੱਗੇ ਪਹਿਲੇ ਇੱਕ ਉਹ ਤਾਂ ਆਪਣੀ ਬਾਤ ਤਬ ظاہر ਹੀ ਹੋ ਇਸ ਕਰਕੇ ਮਤਲਬ ਉਹ ਵੀ ਕਰਦੇ ਜੇ ਤੂੰ ਤੇਰਾ ਪਿਤਾ ਤੂੰ ਜਿਹੜੇ ਮਰਦਾ ਉਰੂਅਰੂ ਵੀ ਗੱਲ ਜੇ ਸਾਡੇ ਨੂੰ ਹੋਇ ਹੋਇ ਜਾਂਦੇ ਨੇ ਤੇ ਤਾਕਤ ਆਪਣੀ ਬੋਲੀ ਹੈ ਰੇ ਆਪਣੀ ਸਧਾਰੀ ਬੋਲੀ ਹੈ ਵਾਣੀ ਸੰਸਾਰੀ ਬੋਲੀ ਕੇ ਪ੍ਰਾਧਾਨ ਨੇ ਸਾਡੇ ਕੋਲ ਹੀਵੇਂ ਬੋਲਦੇ ਅਸੀਂ ਆਪਰੂ ਵੀ ਗਾਉਂਦੇ ਉਰੂ ਵੀ ਗਾਉਂਦੇ ਆਪਰੋਂ ਤਾਂ ਗਾਣੇ ਆਪ ਤੋਂ ਪੈਦਾ ਹੋਇਆ ਹੈ ਇਹਨੂੰ ਉਹ ਬਦਾਂਗੇ ਨੇ ਉਹ ਵੀ ਆਪ ਤੋਂ ਪੈਦਾ ਹੋ ਜਿਹ ਅੰਬ ਤੋਂ ਪੈਦਾ ਹੋਇਆ ਉਹ ਵੀ ਅੰਬ ਜਿਹੜਾ ਅੰਬ ਤੋਂ ਬੱਚ ਪੈਦਾ ਹੋ ਗਿਆ ਇੱਕ ਤੋਂ ਸ਼ਬਦ ਪੈਦਾ ਹੋਇਆ ਵੀ ਭਗਵੰਤ ਹੈ ਤੋਂ ਆਂਬੇ ਪੈਦਾ ਹੁੰਦੇ ਨੇ ਇੱਕ ਤੋਂ ਪੈਦਾ ਸ਼ਬਦ ਹੋਇਆ ਹੈ تم تلگیں افکار اللعبہ میں ہے کہ ਸਾਬਤ ਰਲ ਇੱਕਦ ਤਾਬਤ ਹੋ ਰਿਹਾ ਹੈ। ਹਮੇਸ਼ਾ ਸ਼ਬਦੇ ਪਰ ਰਹਿੰਦਾ ਹੈ। ਸ਼ਬਦਾ ਬੇਸ਼ਾਨੀ ਨਹੀਂ ਕਰਦਾ। ਜੋ ਦਬੇਸ਼ਾ ਦੀ। ਜਦੋਂ ਦਬੇਸ਼ਾ ਬੋਤੋਂ ਦੇ ਬੇਸ਼ਾਨੀ ਨਹੀਂ ਕਰਦਾ। ਬੋਤੋਂ ਦੇ ਬੇਸ਼ਾਨੀ ਇੱਕ ਤੋ ਪੈਦਾ ਹੋ ਹੈ ਸ਼ਬਦ। ਕੀ ਕੀ ਕੀ ਕੀ ਪੈਦਾ ਹੋ ਸ਼ਬਦ। ਇੱਕ ਤਾਂ ਭਗਵਾਨ ਤੋਂ ਪੈਦਾ ਹੋਈ ਚੀਜ਼ ਤਾਂ ਨਹੀਂ ਭਗਵਾਨ ਤੋਂ। ਵੀ ਕਣਕੇ ਕਿ ਜੇ ਨਾਂ ਨਾ ਹੋ ਦੇਣਾ ਨਾ ਪ੍ਰੋਬਲਮ ਖੜੀ ਹੋਣੀ। ਉਹ ਨਾਂ ਨਹੀਂ ਤੇ ਸਾਲ। ਰੋਕੂ ਖੜੀ ਹੁੰਦੀ ਇੱਕ ਦਾੜੇ ਦਾ ਵੀ ਸਾਰੇ ਖੇਤ ਨੂੰ ਕਣਕਾ ਇਹ ਹੋਰ ਕੁਝ ਕਹਤਾ ਹੂੰ ਕੰਨ ਦੀ ਭਜਾਇ ਸਭੋ ਪ੍ਰੋਬਲਮ ਮੜੀ ਹੋ ਜੂ ਤਮਨ ਉਹ ਨਹੀਂ ਆ ਗਿਆ ਬੋਟਾਲੇ ਬੋਟਾਲੇ ਅਰੇ ਮੋਦਕੀ ਆਤੀ ਜਾ ਕੇ ਫਰਕ ਪੈ ਗਿਆ ਸਭ ਆ ਹਾਂ ਇਹ ਤੇ ਬਿਰ ਸੁਭਾਵੀਆ ਚੱਲ ਜੀ ਜਦੋਂ ਸੁਤੇ ਜਾ ਰਹੇ ਬਹੁਤ ਸੁਵਾਲ ਉਸ ਕਿਤਾਬ ਵੀ ਆ ਬੀਆ ਦੇ ਰੱਖ ਉਹ ਉਹਨੇ ਜਿਹੜਾ ਕੰਮ ਦਾ ਮਤਲਬ ਪ੍ਰਸਤ ਕੀਤਾ ਨਾ ਆਇਆ ਸਾਰੀ ਪੂਰੀ ਦੇ ਰਿਆਂ ਸੀ ਇੱਕ ਉੱਪਰ ਤੋਂ ਪੈਦਾ ਹੋਇਆ ਹੈ ਬੂਟਾ ਬੂਟੇ ਤੋਂ ਪੈਦਾ ਹੋਇਆ ਹੈ ਜਿਹੜੀ ਵਸਤੂ ਹੈ ਫਲ ਹੈ ਫਲ ਕਹ ਲੋ ਬੂਟੇ ਤੋਂ ਪੈਦਾ ਹੋਇਆ ਹੈ ਫਲ ਦਾ ਨੋ ਉਹੀ ਹੈ ਜਿਸ ਬੀਜ ਤੋਂ ਬੂਟਾ ਬਣਦਾ ਜਿਸ ਬੀਜ ਤੋਂ ਬੂਟਾ ਬਣਦਾ ਉਹੀ ਉਹ ਕਣਕ ਦਾ ਦਾਣਾ ਪੀਜਿਆ ਕਣਕ ਦਾ ਬੂਟਾ ਵੜਿਆ ਉਹ ਤੋਂ ਜੋ ਪੈਦਾ ਹੋਣ ਬਣ ਪੈਦਾ ਹੋ ਵੀਰ ਦੋਗਾ ਵੀ ਜੀ ਗਿਆ ਨਾਂ ਪੈਦਾ ਹੋਇਆ ਤੇ ਵੀ ਜਗਾ ਵੀ ਗਿਆ ਜਿਹੜਾ ਨਾਂ ਬੋਬੋ ਆਪੇ ਨਾ ਬੀਜ ਦੀਗਾ ਬੀਜ ਵੀ ਨਾਮ ਬੋਬੋ ਵੀ ਨਾਮ ਬੋਬੋ ਵੀ ਨਾਮ ਜੰਮਿਆ ਵੀ ਨਾਮ ਹੈ ਉਤਪੁੱਜ ਚਲਦਾ ਨਾ ਇਵੇਂ ਬੋਲਣਾ pô vitya si na jab aaya kuch hor teri ho sakda oda nu tau aaya ke chakkr te gal vich fark hai kehnde ਜਦ ਕਹਾਂਗੇ ਦਰਦ ਜਿਹੜਾ ਜੰਮੇ ਹੋ ਗਿਆ ਫਤਾਈ ਤਾਂ ਟੋਕਲਾ ਕਰ ਉੱਠਾ ਉਹ ਨਾ ਦੀ ਹੁੰਦੀ ਉਹ ਕਿ ਕਹੋਦੀ ਫਤਾਈ ਇੱਕ ਹੋਵੇ ਤਾਂ ਉਦੋਂ ਹੈ ਇੱਕ ਕੀ ਨਹੀਂ ਮਤਲਬ ਤਾਂ ਸਮਝੀਏ ਕਿ ਕਿਵੇਂ ਕੀ ਹੋਣੀ ਹੈ ਧਿਆਨ ਦੇ ਦੇ ਦੋਸਤ ਕਿੱਕ ਬੇਰ ਕੀ ਕੀ ਦਾਲ ਲਈ ਹੈ ਅਸਲ ਕਿ ਦਾਲ ਲਈ ਕੀ ਦਾਲਵਲੀ ਵਰਗੀ ਦੋ ਹਿੱਸੇ ਹੈ ਉਹ ਸਮਝਾਣ ਲਈ ਦਿੱਤੀ ਕੋਈ ਕਹਿੰਦਾ ਦਾਲ ਕਿਵੇਂ ਉਹ ਦੋ ਹਿੱਸੇ ਕਿਹੜੇ ਕਿਹੜੇ ਹੈ ਉਹ ਦੋ ਹਿੱਸੇ ਨੂੰ ਡਿਫਾਈਨ ਕਰ ਲਿਆ ਤਾਂ ਕੀ ਆਤਮਾ ਆਤਮਾ ਕੀ ਹੈ ਪ੍ਰਾਤਮਿਕ ਆਤਮਾ ਜਿਹੜੀ ਸਰੀਰ ਤੇ ਹੈ ਜਿਹਨੂੰ ਅਸੀਂ ਬਾਦ ਕਹਿੰਦੇ ਹਾਂ ਆਤਮਾ ਅਸਲ ਤੇ ਆਤਮਾ ਕੋਈ ਲਫ਼ਜ਼ ਨਹੀਂ ਹੈ ਆਤਮਾ 1200 ਸੌ ਹਸਪੀਟਲ ਇਹ ਆਇਆ ਲਾ ਜੱਤੋ ਉਦੂਆ ਇਹ ਤੇ ਉਦੂਆ ਕੋਈ ਆਤਮਾ ਲਫ਼ਜ਼ ਹੈ ਬਨਾ ਆਤਮਾ ਸੱਚ ਖਰੇਬੇ ਲਫ਼ਜ਼ ਆਤਮਾ ਅਸਲ ਕੇ ਲਫ਼ਜ਼ਾਤ ਬੁਝੇ ਆਪਣਾ ਨੋ ਜੀਵਤ ਆਪਣਾ ਬੇਰਾਬਰ ਜਿਹੜਾ ਪ੍ਰਾਤਮਿਕ ਜਿਹੜਾ ਕਹਿੰਦਾ ਮੇਰਾ ਬੋਲ ਮੇਰਾ ਮਾਨ ਲੋਚੇ ਕੋਰ ਦਰਸ਼ੂ ਬੋਲਦਾ ਕੋ ਜੋ ਬੋਲਦਾ ਪ੍ਰਾਤਮਿਕ ਨੇ ਆਪਣਾ ਬਨ ਸਰੀਰ ਤੇ ਰੱਖਿਆ ਚੋਰ ਪਰ ਇੱਕ ਉਦਾਹਰਨ ਸੀ ਹੈ ਕਿ 2 4 7 ਪਰ ਚੋਰ ਚੋਰੀ ਕਰਨ ਜਾਂਦਾ ਉਹ ਉਹ ਇੱਕ ਚੋਰੀ ਚਿਤ ਹੋਇਆ ਕੋਈ ਮੈਂ ਜਿਹੜਾ ਗੱਲ ਸ਼ੁਰੂ ਕੀਤੀ ਸੀ ਜਿਹੜੀ ਜਿਹੜਾ ਚਿਤ ਹੋ ਗਿਆ ਚਿਤ ਹੈ ਜਿਹੜਾ ਸਾਨੂੰ ਕੁਝ ਵੀ ਮਤਲਬ ਅਸੀਂ ਕੁਝ ਕੰਮ ਕਰਨ ਲੱਗੇ ਉਹ ਰੁਕਦਾ ਵੀ ਇਹ ਨਾ ਕਰ ਇਸ ਤਰ੍ਹਾਂ ਹੋਏਗਾ ਉਹ ਉਹੀ ਆਤਮਾ ਹੋਈ ਨਾ ਹਾਂ ਹੋਰ ਕੀ ਹੈ ਕਿ ਇਹ ਰੋਕਦਾ ਹੈ ਪ੍ਰਾਤਮਾ ਮਨ ਦੇ ਮਨ ਹੈ ਤਾਂ ਇੱਕੋ ਹੀ ਵੈਸੇ ਆਪਾਂ ਦੋ ਪ੍ਰਾਤਮਾ ਕਿਉਂ ਕਹਿੰਦੇ ਨਾ ਪ੍ਰਾਤ ਜਿਤ ਤੱਕ ਉਹ ਦੇਖੇ ਉਹ ਨਾ ਇਹਨੂੰ ਦਿਓ ਦੇ ਬਰੇ ਕੇ ਸਤ ਪੇ ਦੇ ਠੀਕ ਆਤਮਾ ਤੋਂ ਪਰੇ ਮਰਗੁਤੀ ਤੋਂ ਪਰੇ ਉਹ ਜਿਹੜਾ ਰੋਕਣ ਉਹ ਸੁਣ ਹਰ ਰੋਕਣ ਵਾਲਾ ਉਹ ਪ੍ਰਾਤਮਾ ਹੋਇਆ ਅਰਥ ਕੀ ਹੁੰਦਾ ਹੈ ਆਤਮਾ ਤੋਂ ਪਰੇ ਮਰਗੁਤੀ ਤੋਂ ਪਰੇ ਪਰ ਪਰਾਤਮਾ ਬੇਰੀ ਆਤਮਾ ਤੋਂ ਪਰੇ ਆਤਮਾ ਦੀ ਧੌਲੇ ਤੋਂ ਪਰੇ ਕੋਦਣਾ ਹੋ ਗਿਆ ਪ੍ਰਾਤਮਾ ਪਰ ਆਤਮਾ ਨੂੰ ਆਤਮਾ ਕਹਿਣਾ ਕਾਹੂ ਗਲਤ ਹੈ ਉਹਨਾਂ ਉਹਨਾਂ ਦੀ ਹੈ ਜਿਨ੍ਹਾਂ ਨੇ ਦਾਲ ਬੰਦਿਆਈ ਫਿਰ ਉੱਥੇ ਗਲਤੀ ਕੀਤੀ ਉਹ ਕੀ ਕਰਦੇ ਜਦ ਪ੍ਰਾਤਮਾ ਦੀ ਮਦਦ ਤਾਂ ਪਰਮਾਤਮਾ ਦੇ ਇਹ ਤਾਂ ਹੈ ਕਿ ਇਹੋ ਜਿਹੀ ਕਿਸੇ ਕਿਸੇ ਕੇ ਮੇਜ਼ਬਾਨ ਜੀ ਸਵਾਲ ਇਹ ਠੀਕ ਨਹੀਂ ਆ ਰਹੇ ਪਰ ਆਤਮਾ ਵੀ ਹਿੱਤ ਹੈ ਅਧਿਆਤਮਾ ਆਤਮਾ ਵੀ ਹਿੱਤ ਹੈ ਰੋਕਣ ਵਾਲਾ ਬ੍ਰਹਮ ਵੀ ਹਿੱਤ ਹੈ ਰੋਕਣ ਵਾਲਾ ਬ੍ਰਹਮ ਬ੍ਰਹਮ ਬ੍ਰਹਮ ਇਹ ਸਰੀਰ ਵਿੱਚ ਬ੍ਰਹਮ ਰੋਕਣ ਵਾਲਾ ਹੋ ਗਿਆ ਬ੍ਰਹਮ ਉਹ ਰੋਕਣ ਉਹ ਬ੍ਰਹਮ ਬ੍ਰਹਮ ਪ੍ਰਭ ਜਾਣਤ ਸੇ ਪ੍ਰਭ ਜਿਹਨੇ ਪ੍ਰਭ ਨੂੰ ਜਾਣ ਲਿਆ ਉਹ ਪ੍ਰਭ ਇਹ ਨਹੀਂ ਬੰਤਾ ਜਾਣਦਾ ਇਹ ਕੌਣ ਜਦ ਜਾਣ ਲਿਆ ਜਾ ਪਰਪਾ ਉਹ ਤੋਂ ਪਰਪਾ ਬੇਦਰਜਾ ਜੇ ਜਿਉਂ-ਜਿਉਂ ਮੰਨੀ ਜਾਣ ਲੂੰਗਾ ਜਿਉਂ-ਜਿਉਂ ਜਾਣ ਜਾਊਗਾ ਪਪਾ ਇਹ ਡੈਫੀਨੇਸ਼ਨ ਉਹਨਾਂ ਨੇ ਬਰਮਤੀ ਦਿੱਤੀ ਹੋਈ ਹੈ ਉਹਨਾਂ ਨੂੰ ਕਿਹਾ ਕਿ ਬ੍ਰਹਮਾ ਛੋਟਾ ਹੈ ਵੱਡਾ ਨਹੀਂ ਹੈ ਆਤਮਾ ਤੋਂ ਛੋਟਾ ਹੈ ਪ੍ਰਭੂ ਜਿਹੜਾ ਕਬੀਰ ਮੈਂ ਪਿਆ ਅਦਾਸ ਤੀਰਥ ਵੱਡਾ ਤਹਰਤਾ ਦਾ ਉਹ ਜਿਹੜਾ ਬ੍ਰਹਮਾ ਨੂੰ ਉਹਨਾਂ ਨੇ ਉੱਚਾ ਬਣਾਤਾ ਨਾ ਚੱਕ ਕੇ ਉਹ ਤੋੜਿਆ ਇਹਨਾਂ ਨੇ ਪਾਣੀ ਉਹਦਾ ਤੋੜ ਸੁਲਾਇਆ ਇਹ ਸੈਂਕੜੇ ਤੋਂ ਤਾਂ ਪੰਕਤੀਆਂ ਲਿਖੀ ਹੋਈਆਂ ਉਹ ਬ੍ਰਹਮਾ ਤੋਂ ਉੱਤੇ ਨਹੀਂ ਬੰਦੇ ਤੁਸੀਂ ਬ੍ਰਹਮਾ ਨੂੰ ਇੱਕ ਬੰਦ ਤੇ ਨਹੀਂ ਬੰਦ ਠੀਕ ਹੈ ਠੀਕ ਹੈ ਕੋ ਇੱਕ ਜਿਹੜਾ ਇੱਕ ਹੈ ਉਹ ਇੱਕ ਇੱਕ ਬੇਤੋੜੀ ਇੱਕ ਨੂੰ ਫੋਰ ਦੇ ਕੀ ਲੋਡ ਇੱਕ ਵੀ ਫੁੱਲ ਪਾਵਰ ਇੱਕ ਤੋਂ ਉੱਪਰ ਕੋਈ ਪਾਵਰ ਨਹੀਂ ਦਿੱਤੀ ਇੱਕ ਕਿਸੇ ਨੇ ਵੀ ਇਸ ਕਰਕੇ ਸੱਚ ਖਾਂਣ ਦੇ ਵਿੱਚ ਸਾਰੇ ਇੱਕ ਕਰੇ ਇੱਕ ਦੂਰੇ ਤੇ ਕਿਸੇ ਦਾ ਰੋਵ ਰਾਜ ਨਹੀਂ ਚੱਲਦਾ ਕੋਈ ਦਬਾ ਨਹੀਂ ਕਿਸੇ ਦਾ ਇਸ ਤੋ ਆਜ ਇੱਕ ਕੁੱਤ ਕਿਸੇ ਦਾ ਰਾਜ ਨਹੀਂ ਚੱਲ ਇੱਕ ਆਪਣੇ ਆਪ ਸਧਤੀ ਤੌਰ ਤੇ ਕਿ ਜਿਹੜੇ ਇੱਕ ਇੱਕ ਨੇ ਸਾਰੇ ਇੱਕ ਸੁਰ ਰਹੇ ਦੇ ਇੱਕ ਗਣਤੀ ਤੋਂ ਬਾਹਰ ਇੱਕ ਗਣਤੀ ਵਿੱਚ ਨਹੀਂ ਗਣਤੀ ਤੋਂ ਜੋ ਕਿ ਇੱਕ ਤੋਂ ਗਣਤੀ ਸ਼ੁਰੂ ਇੱਕ ਤੋਂ ਗਣਤੀ ਸ਼ੁਰੂ ਹੋ ਜਵੇ ਅਗਰ ਤਰੀਕਾ ਸਹੀ ਹੋਵੇ ਗਣਤੀ ਦੋ ਤੋਂ ਸ਼ੁਰੂ ਸਾਥੀ ਕਰਨ ਤੇ ਮਤਲਬ ਉਹ ਵੀ ਨਾ ਜਿਸ ਤਸੀ ਗੱਲ ਕਰਦੇ ਸੀ ਕੋਈ ਹੈ ਉਹ ਕਹਿੰਦਾ ਵੀ ਜਿਹੜੀ ਸਾਨੂੰ ਚੋਰ ਚੋਰੀ ਕਰਦਾ ਹੈ ਉਹ ਜੋ ਰੋਕਦਾ ਹੈ ਅਸੀਂ ਅਪਣੇ ਮਨ ਵਿੱਚ ਬਣਾ ਲਿਆ ਆ ਹਾਂ ਹਾਂ ਫਿਰ ਆ ਵੀ ਆਹ ਚੋਰੀ ਕਰਨਾ ਠੀਕ ਨਹੀਂ ਹੁੰਦਾ ਉਹ ਪ੍ਰੀ ਸੈਟ ਹੈ ਇਹ ਕੋਲ ਫਿਰ ਪ੍ਰੀ ਸੈਟ ਹੈ ਹਾਂ ਲੇਕਿਨ ਜੇ ਮੈਦਾਨ ਉਹ ਠੀਕ ਅਸੀਂ ਕਹਿੰਦੇ ਆ ਵੀ ਜੀਬ ਜਾ ਕੇ ਜੀਬ ਨੂੰ ਮਾਰਨ ਦਾ ਨਹੀਂ ਡਾਰਟ ਟੂ ਯੂ ਵਰ ਜਾਣਦਾ ਸਭਾਤ ਜਾਣਦੇ ਠੀਕ ਹੈ ਸਭਾਤ ਤੱਕ ਇਹ ਜਾਣਦਾ ਮੈਂ ਹਨ ساری ਬਾਤ ਜਾਣਦਾ ਕਿ ਜਦੋਂ ਉਹ ਇੱਕ ਬੰਦੇ ਨਾਲ ਪਾਣੀ ਦੀ ਗੱਲ ਕਰਦੇ ਵਰ ਦੀ ਗੱਲ ਕਰਦੇ ਜੇ ਮਾਨ ਸਭ ਬਾਤ ਜਾਣਦਾ ਹੈ ਤੈਨੂੰ ਪਰੋਲੀ ਲੋੜ ਹੈ ਇੱਥੇ ਗੱਲ ਇਹ ਹੈ ਕਿ ਕਬ ਉਸ ਦੋਸਤ ਕੋਲ ਪਾਣੀ ਜਾਣ ਬਹੁਤ ਕੁਝ ਕੋਲ ਮੈਂ ਫਿਰ ਇਹਦਾ ਜਿਹੜਾ ਜਾਣਦਾ ਆਪੂ ਗਲਤ ਹੈ ਉਹ ਵੀ ਕਰੀ ਜਾਂਦਾ ਹੈ ਨਗਿਆਰ ਉਹ ਸੇ ਤੁੰਗ ਆ ਕੇ ਸੱਚ ਤੇ ਪਹਿਰਾਤਾ ਰੰਗ ਚੜਿਆ ਹੋਵੇ ਸੱਚ ਪਹਿਦੀ ਸੋਝੀ ਹੋਵੇ ਬਾਰੇ ਪੈ ਦਿੱਤੀ ਤੇ ਤਰਗਾਦਨ ਰੱਪਾ ਕਰਦੀ ਹੈ ਜੇ ਰ ਪੈ ਕਰਨ ਵਾਸਤੇ ਪੈ ਦੱਤੀ ਹੈ ਪੈ ਦੱਤੀ ਹੈ ਉਹ ਕਹਿੰਦੇ ਜਿਹੜੀ ਤੇਰੀ ਕਲਪਨਾ ਲੋ ਜਿਹੜਾ ਤੇਰਾ ਰਾਗ ਹੈ ਰਾਗ ਤੇਰੀ ਬੋਤ ਇਹ ਤੇਰੀ ਬੋਤ ਸੁਪੀ ਹੋਈ ਹੈ ਇਹ ਪੈ ਦਿੱਤਾ ਉਹਨੇ ਵਰਾਗੀ ਦਾ ਹੈ ਤੇਰੀ ਕੋਈ ਜਮਾਨ ਹੈ ਨਹੀਂ ਦੁਨੀਆ ਦੀ ਵਰਾਗ ਛੱਡ ਤੋ ਵਰਾਗੀ ਹੂੰ ਹੂੰ ਤੇਰੀ ਕੋਈ ਸੰਸਾਰ ਦੀ ਵਸਤੂ ਦੀ ਜਮਾਨ ਹੈਗੀ ਸੰਸਾਰੀ ਹੈ ਭੁੱਖ ਨਾ ਅੜੀਏ ਸੰਸਾਰ ਦੀ ਕੋਈ ਭੁੱਖ ਭਾਣੇ ਦੇ ਵਿੱਚ ਭਾਣੇ ਤੋਂ ਬਾਹਰ ਜਾਊਗਾ ਬਹੁਤ ਹੈ ਭਾਣੇ ਤੋਂ ਬਾਹਰ ਜਾਊਗਾ ਭੁੱਖ ਇਸ ਹੱਥ ਪਰ ਤਾਂ ਪਾਣੀ ਤੋਂ ਬਾਹਰ ਜਲੋ ਮਰੀ ਬਹੁਤ ਹੈ। ਪਿੱਜਰੇ ਦੇ ਵਿੱਚੋਂ ਸ੍ਰੀ ਬਾਹਰ ਕੱਢਣ ਜਤੋਤਾ। ਬਿੱਲਾ ਬਾਹਰ ਖੜੇ। ਉਹਦੇ ਸ੍ਰੀ ਬਾਹਰ ਲਾਣੀ। ਤੋਤਾ ਜਾਏ ਨਿਕਲੇ ਨਾ ਨਿਕਲੇ ਉਹ ਤਾਂ ਉਹ ਜਿੰਨਾ ਫੜੇ ਉਹ ਖੜਦੇ। ਬਾਜੀ ਜਸਰ ਨਿਕਲੀ ਸੋਰਾ ਨੇ ਫੜਨੇ। ਇਹ ਬਹੁਤ ਇਹ ਇੱਕ ਹੋਈ ਹੋਈ ਹੈ ਬਰਾਦੀ ਨਹੀਂ ਹੈ ਬਰਾਗੀ ਦੀ ਇਹ ਤਗਲਾ ਇਹ ਅਗਲਾ ਅੱਗੇ ਚਲੇਗੇ ਮਤਲਬ ਆਤਮਾ ਪ੍ਰਾਤਮਾ ਆਪਾਂ ਕਹਿੰਦੇ ਤੇ ਜੋ ਸੁਣਨ ਵਾਲਾ ਉਹ ਇੱਕ ਹੋਵੇ ਦੋਨੋਂ ਹੋਵੇ ਇੱਕੋ ਰੀਸੈਟਰ ਹੋਰ ਜੋ ਜਿਹਨੂੰ ਕਹਿ ਰਿਹਾ ਚੋਰ ਚੋਰੀ ਕਰ ਰਿਹਾ ਉਹਨੂੰ ਰੋਕ ਰਿਹਾ ਦੋਨੋਂ ਇੱਕ ਹੋ ਜਾਣਾ ਉਹ ਚੋਰੀ ਕਰਨਾ ਛੱਡ ਦੇਵੇ ਆਪਣੇ ਅੰਦਰਲੇ ਦੀ ਗੱਲ ਮੰਨ ਲਵੇ ਤਾਂ ਪ੍ਰਾਤਮਾ ਤੇ ਆਤਮਾ ਇੱਕ ਹੋ ਜਾਂਦੇ ਕੱਲ ਹੋਣਗੇ ਕਦੇ ਹੋਣਗੇ ਕਿਉਂ ਨਹੀਂ ਹੁੰਦੇ ਇਹ ਸਵਾਲ ਹੈ ਹਾਂ ਇਹ ਇਹ ਇੱਕਲੇ ਸਵਾਲ ਹੈ ਉਹਦੇ ਨਾਲ ਇੱਕੋ ਪੁਆਇੰਟ ਤੇ ਗੱਲ ਹੋਈ ਸੀ ਇਹ ਵਾਲੀ ਕਿੰਨਾ ਵੀ ਪ੍ਰੀਸੈਟ ਨੂੰ ਛੱਡਣਾ ਹੈ ਪ੍ਰੀਸੈਟ ਦੀ ਗੱਲ ਨਹੀਂ ਮੰਨੀ ਛੱਡਣਾ ਦਿੱਤੋ ਨਹੀਂ ਦੇ ਵੀ ਇੱਕ ਮੈਂ ਥੋੜਾ ਜਿਹਾ ਸੁਣ ਇੱਕ ਥੋੜੀ ਜਿਹੀ ਗੱਲ ਕਲੀਅਰ ਕਰੋ ਕੇ ਛੋਟਾ ਚਲੇ ਜਾਓ ਹਾਂ ਬਸ ਆਹ ਰਕੀ ਕੇ ਕਿਹਦਾ ਅਗਲੀ ਗੱਲ ਹੋਵੇ ਬਸ ਇਹਦਾ ਇੱਕ ਪੁਆਇੰਟ ਰਸਾ ਘਾਂ ਦਾ ਫੜ ਲਿਆ ਦੂਆ ਦਿਖਿਆ ਨਹੀਂ ਜੀ ਕਿ ਕਹਾ ਹੱਥ ਉੱਤੇ ਪਾਇਆ ਹੀ ਨਹੀਂ ਆਹ ਇਹੀ ਪੁਆਇੰਟ ਤੇ ਗੱਲ ਹੋਏਗੀ ਉੱਤੇ ਵਾਲਾ ਹੱਥ ਪਾਇਆ ਨਹੀਂ ਥੱਲੇ ਵਾਲਾ ਝੜਦਾ ਤਾਂ ਤੋਂ ਪਰ ਆਪੇ ਪੈ ਜਦੋਂ ਹੱਥ ਪੈ ਗਿਆ ਦੂਜਾ ਆਪੇ ਛੁੱਟ ਜਾਂਦਾ ਇਹ ਪੈ ਗਿਆ ਛੱਡੂ ਦੋ ਹੱਥ ਨੇ ਇਹ ਕਉਤੇ ਪਾਇਆ ਆ ਨਹੀਂ ਜਰਨਲ ਜੇ ਦੋ ਇਕੱਠੇ ਜੜਦੇ ਹੋਵੇ ਧਲਾ ਥੱਲੇ ਫ੍ਰੀਜ਼ ਜਿਹੜਾ ਕੇ ਤਾਂ ਥੱਲੇ ਵਾਲਾ ਛੱਡੇ ਹਾਂ ਬਿਲਕੁਲ ਠੀਕ ਕਾਹੀ ਬਹੀ ਗਲਤੀ ਕੋਈ ਨਹੀਂ ਕਰਨਾ ਚਾਹੇ ਉਹ ਥੱਲੇ ਆ ਤੇ ਦੀਵਰ ਤੇ ਜਿਹੜਾ ਉੱਤੇ ਪਾਇਆ ਉਹ ਤਾਂ ਉਹ ਥੱਲੇ ਪਰ ਜਦੋਂ ਉੱਤੇ ਵਾਲਾ ਮਜ਼ਬੂਤ ਹੋ ਕੇ ਪੈ ਗਿਆ ਤਾਂ ਥੱਲੇ ਵਾਲਾ ਛੱਡੇ ਤੇ ਫੇਰ ਉੱਤੇ ਥੱਲੇ ਵਾਲਾ ਫੇਰ ਉੱਪਰ ਨੂੰ ਜਾਂਦਾ ਲੇ ਲਾ ਲਾ ਵੀਰ کہاں ਜੋ ਐ ਰੀਅਲ ਆਇਆ ਉਹ ਤਾਂ ਠੀਕ ਹੈ ਜੋ ਕਰ ਰਹੇ ਹੋ ਉਹ ਆਪਾਂ ਉੱਤੇ ਚੰਡ ਜਦੋਂ ਗੁਰੂ ਗੋਬਿੰਦ ਸਿੰਘ ਜੀ ਪੁੱਛਦਾ ਪੀਰ ਕਿ ਗੱਲ ਜਵਾਬ ਉਹਦੇ ਵਿੱਚ ਜਵਾਬ ਆ ਜਾਣਾ ਇਹਦੀ ਗੱਲ ਦਾ ਜਵਾਬ ਕਈ ਵਾਰ ਕਿ ਕੇ ਗਿਆ ਹੈ 3 ਦਿਨ ਹੋ ਗਏ ਮੈਂ ਮੈਸੇਜ ਨਹੀਂ ਕੀਤਾ ਮੈਨੂੰ ਲੱਗਦਾ ਵਿਦਵਾਨ ਹੋ ਗਿਆ 3 ਚੱਲੇ ਹੀ ਆਹੋ ਮੈਂ ਤਾਂ ਗਲਤੀ ਹੋਰ ਪੁੱਛਿਆ ਆ ਗਿਆ ਮੇਰਾ ਤਾਂ ਪੁਆਇੰਟ ਹੈ ਜੀ ਅਸਲੀ ਖੱਡਣਾ ਵੀ ਹੈ ਪਰ ਛੱਡਣਾ ਇਸ ਤਰੀਕੇ ਰੀਸੈਟ ਨੂੰ ਮੰਨ ਕੇ ਛੱਡਣਾ ਹੈ ਭਈ ਅਗਲਾ ਆਊਗਾ ਕੋਣ ਆ ਦੇਣਾ ਇੱਥੇ ਖੜਾ ਹੈ ਆ ਚੜਾਈ ਆ ਗਈ ਆ ਪੈਰ ਇੱਥੇ ਟਿਕ ਗਿਆ ਠੀਕ ਹੈ ਐ ਪੈਰ ਤੇ ਬਜਰ ਦੇ ਗਈ ਆ ਚੱਕਣਾ ਬਿਨਾ ਪ੍ਰੀਸੈਟ ਨੂੰ ਮੰਨੇ ਤੱਕ ਅੱਗੇ ਚੱਲਣਾ ਵਾ ਸਾਰਾ ਬਜਨ ਤਾਂ ਇਹ ਬਾਹਰ ਤੇ ਆ ਗਿਆ ਚੱਕਰ ਤੇ ਇੱਥੇ ਕੋਈ ਓਕੇ ਮੈਂ ਸਾਰਾ ਬਜਨ ਤਾਂ ਜਾ ਦੇ ਪੈਰਾਂ ਪਰ ਚੱਕ ਉੱਤੇ ਰੱਖਣ ਸਾਰਾ ਬਜਨ ਤਾਂ ਇਸੇ ਪੈਰ ਤੇ ਆ ਗਿਆ ਇਹ ਐ ਨਹੀਂ ਜੜ ਹੁੰਦਾ ਇਹ ਇਹ ਐ ਜੜ ਹੁੰਦਾ ਆ ਪੈਰ ਉੱਤੇ ਰੱਖ ਲੈ ਠੀਕ ਹੈ ਪਰ ਉੱਤੇ ਰੱਖ ਲੈ ਕਿਉਂਕਿ ਪੜਾਈ ਚੱਕ ਕੇ ਇੱਥੇ ਰੱਖ ਲੈ ਆ ਫਿਰ ਇਹ ਰੱਖ ਪੈਰ ਤੇ ਚੜੋਗੀ ਕਿਹੜਾਈ ਦੋ ਇਹ ਜੜੋ ਬਰਬਦੀ ਹੋ ਚੱਲ ਗਈ ਪੂਰੇ ਕੋ ਇਹ ਨਾ ਇਹ ਹੈ ਜੇ ਤੇ ਦੋਇ ਚਰਨ ਇਹਦਾ ਪਤਾ ਨਹੀਂ ਦੋ ਹੀ ਸ਼ਰਤ ਬਦੁਤੀ ਦਾ ਰਿਤਵਾਰ ਹੈਗਾ ਪਤਾ ਨਹੀਂ ਲੈਦਾ ਕਿ ਦੋ ਕਿਰਜੀਗਾ ਪਤਾ ਨਹੀਂ ਲੈਦਾ ਹਾਂ ਐਵੇਂ ਚੱਲ ਕਿਉਂਕਿ ਜੋ ਗਿਆਨ ਲੈ ਰਿਹਾ ਹੈ ਸੂਰਟਾ ਪੜਾਵਤ ਕਰ ਕਰ ਕਰੀ ਪੜਾਇਆ ਕਿਉਂ ਬਦੂ ਜਿੱਤਨੀ ਜੋ ਗਲਤ ਚੀਜ਼ ਹੈ ਉਹ ਤਾਂ ਆਪਣੇ ਛੋਟ ਜਿਹੇ ਜਦੋਂ ਮੱਖੀ ਜਦੋਂ ਮੰਨਣ ਲੱਗ ਗਿਆ ਜਦੋਂ ਆਪਾਂ ਤੇਰੀ ਸੈੱਡ ਨੂੰ ਮੰਨਣ ਲੱਗਦੀ ਸੱਚਮੁੱਚ ਹੀ ਮੰਨਣ ਲੱਗਦੀ ਹੈ ਉਹ ਜੋ ਗੰਦ ਆਪਣੇ ਆਹੀ ਗੱਲ ਇੱਥੇ ਆਪਾਂ ਹੀ ਛੁੱਟ ਗਿਆ ਡੈੱਡ ਵੀ ਨਵੇਂ ਲਵ ਚ ਕੱਢਿਆ ਪਹਿਲਾ ਬੰਦੀ ਹੋਈ ਆਪਾਂ ਮਨੋਤ ਕਹਿੰਦੇ ਸੈੱਟ ਕਹਿੰਦਾ ਇਹਨੂੰ ਪਹਿਲੀ ਛੁਣਾਉਂਦਾ ਪਹਿਲੀ ਛੁਣਾਉਂਦੀ ਆ ਮਨੋ ਮਨੋ ਛੁਣਾਉਂਦੀ ਆ ਮਨਨ ਅੱਛਾ ਕੇ ਬੜੇ ਹਾਂ ਪੜੇ ਲਿਖੇ ਨੂੰ ਬਣਾਉਣ ਲਈ ਤਾਂ ਵੀ ਜਨਰੇਸ਼ਨ ਕਰਨੀ ਪਈ ਪ੍ਰੀਫੇਡ ਤੋਂ ਬਰੀ ਪਹਿਲਾ ਬਣਾ ਹੋਇਆ ਆਹੋ ਹੋਹ ਸਹੀ ਹੈ ਜਿਹੜਾ ਮੰਨਿਆ ਹੋਇਆ ਆਪਣਾ ਅੱਜ ਗੁਰੂ ਕੀ ਆਜੇ ਤਿੰਨ ਦਿਨ ਦਾ ਹੀ ਕੰਮ ਸੀ ਗੁਰੂ ਗੋਬਿੰਦ ਸਿੰਘ ਜੀ ਤੋਂ ਦੇਖ ਉੱਚਾ ਪੀਰ ਕਬੜ ਜੇ ਕਲੀਅਰ ਕਰੇ ਨਾ ਕੰਤ ਕੇ ਗਏ ਕੇ ਕੇ ਜਾ ਰਹੇ ਹਾਂ ਆਪਣਾ ਵੇਸ ਬਦਲ ਕੇ ਛੁਪ ਕੇ ਜਾ ਰਿਹਾ ਦੇ ਅੰਦਰੋਂ ਆਵਾਜ਼ ਨਹੀਂ ਆਈ ਇਹ ਵਾਲੀ ਜੀ ਗੁਰੂ ਗੋਬਿੰਦ ਸਿੰਘ ਜੀ ਧੋਖਾ ਉਹ ਕਹਿੰਦਾ ਉਹ ਦਿੱਤੀ ਹੈ ਉਹ ਧੋਖਾ ਕੇ ਮੈਂ ਕਹਿਆ ਤੁਹਾਨੂੰ ਉਹ ਕੀ ਹੈ ਫਿਰ ਅਰੇ ਧੋਖਾ ਵਾਲਾ ਕੀ ਨਸਾਨ ਹੋਇਆ ਕਿਨਾਂ ਦਾ ਉਹ ਤਾਂ ਰਾਜਨੀਤੀ ਯੁੱਧਨੀਤੀ ਧਰਮਨੀਤੀ ਲੜਾਈ ਹੈ ਉਹ ਫੜਣਾ ਲੈ ਰਿਹਾ ਮੈਂ ਛੱਟਣਾ ਉਹ ਕੀ ਦੋ ਘੋੜ ਦੇ ਨਿਪਲਮਾਨ ਲੜਾਈ ਲੜਦੇ ਦੋ ਉમે ਛੁਪ ਕੇ ਜਾਂਦੇ ਆ ਉਹ ਸ਼ੋਰਾਂ ਦੇ ਵਿੱਚ ਭਾਈ ਜੱਲਾ ਕੇ ਨਿਕਲੇ ਕਿੱਥੇ ਉਹ ਪਾਣੀ ਐਵੇਂ ਕੇ ਨਿਕਲੇ ਤਾਲੀ ਮਤਲਬ ਥੋੜੀ ਨਾਲ ਗਵਾਂਡੀ ਉਹ ਨਹੀਂ ਨਹੀਂ ਜਿਹੜੇ ਪਾਗਲ ਨੇ ਨੇ ਇਹ ਸੁਣੋ ਮੇਰੀ ਨਹੀਂ ਮਾਰਦੇ ਨਿਕਲ ਨਹੀਂ ਸਕਦੇ ਇਹ ਵੀ ਯੁੱਧ ਦਿੱਤੀ ਲਾਈਨ ਲੱਗੀ ਹੋਈ ਹੈ ਪਸਾਨਾਂ ਜਲਦੀਆਂ ਨੇ ਵੋਡੇ ਨਾ ਮੋਡਾ ਜੋੜੀ ਜੜੇ ਤੇ ਲਾਈਨ ਕੋਲਡਿੰਗ ਵਿੱਚ ਤਾੜੀ ਮਾਰੇ ਤੇ ਲਾਈਨ ਟੁੱਟੀ ਹੈ। ਮੈਂ ਚੱਲੇ ਆ ਤਕੜੇ ਹੋ ਜੋ ਹਾਉ ਉੜ ਦੌੜ ਪੈ ਗਈ ਲਾਈਨ ਟੁੱਟ ਗਈ। ਲਾਈਨ ਟੋੜੀ ਸੀ ਤਾਂ ਤਾੜੀ ਮਾਰ ਕੇ ਉਹ ਵੀ ਉਹ ਦੀ ਗੱਲ ਸੀ। ਜੇ ਪਾਸੇ ਲਾ ਲਈ ਲਾ ਲਓ। ਨਹੀਂ ਆ ਦਿਆ ਸਾਲਾ। ਉਹ ਹੈਗੀ ਦੋਿਆਂ ਨੂੰ। ਉਹ ਤਾੜੀ ਐਸ ਤੁਸੀਂ ਕੱਲ੍ਹ ਲਾ ਲੇ। ਲਾਈਨ ਤੇ ਟੁੱਟਦੀ। ਵੋਡੇ ਨਾ ਮੋਡਾ ਜੋੜ ਕੇ ਆਦਮੀ ਖੜਾ ਚਾਰ ਆਦਮੀ ਛੱਡ ਕੇ ਮਸਾਲਾ ਲੇ ਫੋੜ ਪੰਜਵੇਂ ਆਦਮੀ ਕੋਲ ਆਏ ਆਦਮੀ ਖੜੇ ਨੇ ਦੋਵੇਂ ਚਾਚਾ ਅਚਰਮਾ ਤੇ ਹਾਂਜੀ ਪੰਜ ਚਾਰ ਕਰਮਾ ਦੇ ਆਦਮੀ ਖੜੇ ਕੋਡੇ ਨੂੰ ਗੋਡੇ ਕੋਲੇ ਹੁਕ ਤੇ ਪੰਜ ਚਾਰ ਕਰਮਾ ਕੀ ਹੁੰਦਾ ਹਾਂਜੀ ਫਿਰ ਹਰ ਪੰਜਵੇਂ ਆਦਮੀ ਕੋਲ ਮਸਾਲਾ ਲੈ ਮਸਾਲਾ ਹੀ ਉੜ ਰੋਸ਼ਨੀ ਕਰ ਰੂ ਹੁਣੋ ਕਿ ਮੈਂ ਤੋਰ ਕੇ ਜਾ ਕੇ ਲੈ ਆਂ ਤੇ ਕਿਰੇ ਦੇ ਪਿਛੇ ਰਕੜੇ ਨੇ ਘੇਰਾ ਬਾਹਰ ਸੀ ਪਤਾ ਦਿਉਣਾ ਨੂੰ ਇੱਥੇ ਆ ਕੇ ਕਿਲੇ ਦਾ ਦਰਵਾਜ਼ਾ ਬਾਹਰ ਕੀਤਾ ਉਹ ਨੂੰ ਇਹਦਾ ਪਤਾ ਸੀ ਬਾਗਰੂ ਦੇ ਬਾਹਰ ਖੜਾ ਹੈ ਉਹ ਨੂੰ ਇਹਦਾ ਪਤਾ ਦਰਵਾਜ਼ੇ ਦਾ ਉਹ ਦਾ ਵਿਰੁੱਧ ਸੀ ਦਰਵਾਜ਼ਾ ਦਰੋਂ ਦੇ ਬਾਹਲੇ ਪਾਸੇ ਖੜੇ ਸੀ ਉਹ ਲਾਈਨ ਕਿਵੇਂ ਤੋਰ ਜੋ ਪਿਛੇ ਘੜ ਲੈਣ ਕਰਕੇ ਕਿਹੜੇ ਪਾਸੇ ਉਹ ਘਰੇ ਟੈਕ ਕਰਦਾ ਇੱਕੜ ਦੇਖ ਪੇ ਨਾਮ ਆਦਿ ਲਿਖਾਉਂ। ਨਾ ਇਹੋ ਜਿਹੀ ਦਿੱਤੀ ਦਾ ਪਤਾ ਹੈ ਇਹਨਾਂ ਲੋਕਾਂ। ਨਾ ਧਰਮ ਦੀ ਦਿੱਤਾ ਪਤਾ ਹੈ। ਸੁਣ ਗਏ। ਵੀਡੀਓ ਰਾਜਨੀਤੀ ਦਾ ਪਤਾ। ਇਹੋ ਜਿਹੀ ਦਿੱਤੀ ਹੈ। ਇਕੜ ਦੇਖ ਬੁਰੀ ਮਾਰਦਾ ਢੱਕਣ ਤੇ ਫਿਰ ਨਾ ਜਮਾਲ ਸੀ। ਇਹ ਦਾੜੀ ਮਾਰ ਕੇ ਨਿਕਲਣਾ ਕਿਲੇ ਦਰਵਾਜਾ ਖੋਲ ਕੇ ਨਿਕਲਦੇ ਫਿਰ ਉੱਥੇ ਆ ਕੇ ਦਾੜੀ ਮਾਰਨੀ ਸੀ ਜੇ ਦਾੜੀਓਂ ਮਾਰਨੀ ਸੀ ਦਰਵਾਜਾ ਖੋਲ ਕੇ ਨਿਕਲਦੇ ਫਿਰ ਨਹੀਂ ਤੇਰੇ ਬਾਹਰ ਸਵਾਲ ਦਾ ਜਵਾਬ ਹੈ ਕਿਸਨ ਦਾ ਦੋ ਜਵਾਬ ਕਿਸਨ ਦਾ ਜੇ ਇੰਨੇ ਬਹਾਦਰ ਸੀ ਕੜੀ ਦਾ ਦਰਵਾਜਾ ਖੋਲ ਕੇ ਨਿਕਲ ਜਾਂਦੇ ਫਿਰ ਦਰਵਾਜੇ ਦਰਵਾਜੇ ਘਰੋਂ ਨਿਕਲੇ ਫਿਰ ਜਦੋਂ ਬੋਰਡ ਜਿਹੜਾ ਉਹ ਦੇ ਘਰਾਂ ਵਿੱਚ ਜੇ ਤਾਂ ਦੂਇਰੇ ਸਵਾਲ ਕੀਤਾ ਉਦੋਂ ਉਹ ਬੰਦ ਹੋ ਜਾਊਗਾ ਕੋਈ ਜਵਾਬ ਨਹੀਂ ਹੈਗਾ ਮਨਮੋਖਾ ਹੈ ਜੀ ਇਹਨੂੰ ਬਾਹਰ ਕੀ ਤਾੜੀ ਤਾੜੀ ਨਹੀਂ ਹੈ ਤਾੜੀ-ਤਾੜੀ ਹੈ ਉਹ ਐ ਖੜੇ ਰਿਹਾ ਬੋਟੇ ਦੇ ਉਹਦਾ ਲਈ ਬਗੈ ਫਿਰ ਡੱਕ ਕੇ ਮੈਂ ਉਹਨੇ ਜਾਣਾ ਕੇਰਾ ਤੋੜ ਕੇ ਉਹ ਦੇਖ ਲੈ ਸਿੱਧੇ ਪ੍ਰਹਾਰ ਕਰਨ ਲੱਗ ਜੰਦੇ ਬਚ ਕੇ ਬਸਲ ਜੂਗੀ ਪੋਰਾ ਨੇ ਉਹਨਾਂ ਦੀ ਰੇਤ ਤੋਂ ਪਰੇ ਕਹਤਾ ਵੀ ਗਿਆ ਮੈਂ ਸਖਾਣਾ ਜ਼ਰੂਰ ਤਖੜੇ ਹੋ ਜੋ ਸਾਰੇ ਹਵੜ ਦੋੜ ਬੜਾ ਬੜਾ ਆ ਵੀ ਕਿਧਰ ਨੂੰ ਗਿਆ ਸਾਰੇ ਹਵੜ ਦੋੜ ਭਾਈ ਆਫੜਾ ਥੋੜੀ ਡਾਕੂ ਇੱਧਰ ਨੂੰ ਆ ਜਾਏ ਆਪਾਂ ਗਲੀ 'ਚ ਖੜੇ ਹੋਈਏ ਉਹ ਤੋਂ ਬਗ ਰੌਲਾ ਪਾ ਕੇ ਡਾਕੂ ਵੀ ਓਟ ਦੇ ਵਿੱਚ ਛੱਡ ਕੇ ਗੱਲ ਕਰੀਏ ਉਹ ਪਟਾਕਾ ਚੱਲ ਜਾਏ ਕਿਆ ਹੈ ਉਹ ਭੀੜ ਦੇ ਵਿੱਚ ਸਾਰੇ ਭੱਜ ਲੈਂਦੇ ਨੇ ਉਹ ਉਹ ਕੇਰਾ ਟੁੱਟ ਗਿਆ ਕੇਰਾ ਟੁੱਟਣਾ ਸੀ ਬਸ ਸਾੜਾ ਨਹੀਂ ਬਈ ਪਸਾਰਾ ਗੁੱਝ ਗਈ ਉਹ ਹਾਂ ਫਿੱਟੇ ਹੋ ਉਹ ਗਏ ਉਹ ਗਏ ਆਪਰਾਣਾ ਬਾਤਾ ਗਿਆ ਇੱਧਰੂ ਗਿਆ ਹੋ ਜਾਂਦਾ ਆਪ ਪਹਿਲਾਂ ਆਪਰਾਣਾ ਪਾਇਆ ਹੋ ਗਿਆ ਹੋ ਗਿਆ ਤਾੜੀ ਪਹਿਲਾਂ ਤਾੜੀ ਮਾਰੀ ਹੈ ਕਿਹਾ ਵੀ ਮੈਂ ਚੱਲਿਆ ਫਿਰ ਕਹਤਾ ਹੋ ਗਿਆ ਓਏ ਹੋ ਗਿਆ ਉਹਨੇ ਕਹ ਵੀ ਸਾਡੇ ਬੰਦੇ ਨੇ ਹੋ ਗਿਆ ਹੋ ਗਿਆ ਆਵੇ ਗਿਆ ਆਇਆ ਪਰ ਆਇਆ ਪਰਣਾ ਇਹ ਨਹੀਂ ਛੋੜਨੀ ਹੈ ਇਹ ਜੋਧਨੀਤੀ ਹੈ ਜੋਧਨੀਤੀ ਹੈ ਇਹ ਅੱਛਾ ਬਾਬਾ ਜੀ ਤੁਹਾਨੂੰ ਪਰ ਪੜ੍ਹਦੇ ਹਾਂ ਆਪਾਂ ਜਿਵੇਂ ਮਿਲ ਉਹ ਤੇ ਬੇਤ ਦੀ ਗੱਲ ਕੀ ਕੋਈ ਸੁਣ ਤੇ ਜਾ ਰਿਹਾ ਆਪਣਾ ਬਦਲ ਕੇ ਜਾ ਰਿਹਾ ਚੋੜੀ ਗਾ ਕੇ ਸਾਹ ਬੜੇ ਕੇ ਚੋੜੀ ਕਿਤੇ ਆਪਾਂ ਜੇ ਤੋਂ ਆਪਾਂ ਬਹੁਤ ਕੰਮ ਲੰਗੇ ਹੋਵਾਂਗੇ ਤੇਨਾ ਟੈਸਟ ਅਕਲ ਦੇ ਰਹੇ ਨੇ ਵੀ ਐਸ ਪੋਜੀਸ਼ਨ 'ਚ ਵੀ ਬੇਰੀ ਅਕਲ ਪੂਰੀ ਕੰਮ ਕਰਦੀ ਆ ਤੁਹਾਡੀ ਕਿਸੇ ਦੇ ਨਹੀਂ ਕਰਦੀ ਅਕਲ ਕੰਮ ਅਕਲ ਤੁਹਾਡੇ ਲੋਕ ਕਿੰਦੀ ਕੰਮ ਕਰਦੇ ਕੋਈ ਭੈਰ ਹੀ ਪੂਰੀ ਕੰਮ ਕਰਦੀ ਇਹ ਤਨੂ ਕਿ ਕਿ ਜਾਂਦੇ ਸੀ ਮੈਂ ਪੂਰਾ ਹੱਥ ਫੋੜੇ ਪਾਸੇ ਜਾਵੜੇ ਵੀ ਐਸੀ ਸਿਚੁਏਸ਼ਨ ਹੈ ਬੰਦਾ ਉਹ ਹੀ ਰਾਹੌਣ ਨਾਲ ਅਗਲੇ ਕਦਮ ਹੋ ਜਾਂਦੀ ਉਹ ਬੇਵਕੂ ਬਣਾ ਰਹੇ ਸਾਰਿਆਂ ਨੂੰ ਬੇਵਕੂ ਬਣਾ ਰਹੇ ਨੇ ਐ ਲੋਕ ਵੀ ਬੇਵਕੂ ਗੁਰੂ ਆ ਸੁੱਭਕੇ ਲਾਉਂਦੇ ਨੇ ਨੋਬੇ ਤਾਂ ਹੋਏ ਠੀਕ ਬੇਕੂਬੁਲਾ ਨਹੀਂ ਬੰਦੇ ਤਾਂ ਹੀ ਬੰਦਲੇ ਨੇ ਐਸੋਹਾਂਗਾਂ ਲੈ ਦੁਗੀਏ ਕੋਈ ਸਾਹਮਣੇ ਵਾਲਾ ਹੋਵੇ ਜੀ ਥੋਲ ਖੜਾ ਕਰ ਦੋ ਆਪਣੇ ਮਨ ਆਪਣਾ ਸਵਾਲ ਨਹੀਂ ਪੁੱਛਿਆ ਹਾਂ ਜਿਹੜੇ ਲੜਾਈ ਲੜੇ ਤੇ ਬਿਨਾਂ ਜਿੱਤ ਜਾਣ ਉਹ ਪਹਿਲੇ ਨੰਬਰ ਤੋਂ ਲੜਾਈ ਬਿਨ ਲੜੇ ਤੇ ਜਿੱਤ ਲੜਾਈ ਲੜ ਕੇ ਜੱਟ ਦੇ ਜੀ ਦੇ ਬਾਬਾ ਕਲੀਅਰ ਹੋ ਗਿਆ ਜੀ ਆਪ ਇੱਕ ਬੋਲੀ ਬੋਲੀ ਪੁਆਇੰਟ ਦਾ ਅਗਲਾ ਸਵਾਲ ਲੈ ਗੁਰਬਾਣੀ ਅਤਮਾ ਰਾਮ ਨਾ ਦੂਜੇ ਕਿਉਂ ਸੁਖ ਹੋਏ ਜੇ ਆਤਮਾ ਔਰ ਰਾਮ ਆਤਮਾ ਜਿਹੜੀ ਹੈ ਜੀ ਰਾਮ ਉਹਦੀ ਹੋਰ ਕਿਸ ਨੂੰ ਪੂਜੇ ਰਾਮ ਨੂੰ ਛੱਡ ਦੂਜੇ ਦੂਜਾ ਲਫ਼ਜ਼ ਆਮਨਾ ਬੁੱਝਣੀ ਦੂਜੇ ਕਿਉਂ ਸੁਖ ਹੋ ਆਤਮ ਰਾਗ ਨੂੰ ਛੱਡ ਕੇ ਦੂਜੇ ਹੋਰ ਕਿਸੇ ਨੂੰ ਪੁੱਜਦੀ ਹੈ ਦੂਜਾ ਲਫ਼ਜ਼ ਆਪਣੇ ਆਪ ਜੀ ਇੰਪੋਰਟੈਂਟ ਦੂਜਾ ਆਪਣੇ ਸ਼ਰੀਰ ਤੋਂ ਅਲੱਗ ਆ ਆਪਣੇ ਹਿਰਦੇ ਤੋਂ ਬਾਹਰ ਆਤਮਨੋ ਛੱਡ ਕੇ ਉਹ ਤਾਰ ਕੁਝ ਵੀ ਕਰਦੀ ਹੈ ਜਿਹੜਾ ਤਨਮਨ ਅਰਪੂ ਪੂਜੀ ਚੜਾਉਂਦਾ ਉਹ ਬਰਦੇ ਅਰ ਬੁੱਢੀ ਦੇ ਸਾਰਾ ਤਨ ਬੁੱਢੀ ਦੀ ਜ਼ਿੰਦਗੀ ਪ੍ਰਾਤਮਨ ਦੇਤ ਪ੍ਰਾਤਮਨ ਦੇ ਬਸ ਬਾਹਰ ਕਿਤੇ ਕੁਝ ਨਹੀਂ ਬਾਹਰ ਹੋ ਲੈ ਰਾਮ ਤੈਨੂੰ ਗਿਆ ਜੀ ਰਾਮ ਪ੍ਰਾਦਾਨੋ ਆਤਮਾ ਨਾ ਕਲੀਅਰ ਵਗੈਰੀ ਦੀ ਬਾਤ ਸੀ ਗੱਲ ਉਹਦੇ ਕਈ ਨਾਮ ਨੇ ਸੱਚਾ ਜਾਂਦੇ ਠਾਕੁਰ ਵੀ ਹੋਈ ਹੈ ਠੀਕ ਹੈ ਸਤਗੁਰੂ ਵੀ ਹੋਈ ਹੈ ਠੀਕ ਹੈ ਕਰ ਰਹੇ ਹੁੰਦੇ ਅਸੀਂ ਕੰਮ ਕਰ ਰਹੇ ਹਾਂ ਮੇਰੀ ਅੰਦਰੋਂ ਆਤਮਾ ਨਹੀਂ ਮੰਦੀ ਉਹ ਅੰਦਰਲੀ ਆਤਮਾ ਪ੍ਰਾਤਮਾ ਹੀ ਨਾ ਇਹ ਗੱਲ ਗੱਲ ਪਹਾਰ ਲਈ ਆਤਮਾ ਵੀ ਕਰ ਰਹੇ ਉਹ ਮਜਬੂਰੀ ਨੂੰ ਵਾਹਲਾ ਵੀ ਮਜਬੂਰੀ ਨੂੰ ਕਰ ਰਿਹਾ ਹੈ ਪਹਾਰ ਨਾਲ ਵੀ ਮਜਬੂਰੀ ਨੂੰ ਕਰ ਰਿਹਾ ਹੈ ਨਹੀਂ ਤਾਂ ਆਤਮਾ ਦੀ ਗੱਲ ਨੂੰ ਸੁਰਦਾ ਨਹੀਂ ਚੱਲਣਾ ਕੱਟਾ ਹੈ ਕਿਤਾ ਦਲੀ ਨਾਲ ਹੈ ਤਾਂ ਠੀਕ ਹੈ ਨਾ ਬੇਬਾਕ ਜਦੋਂ ਜੋ ਕੁਝ ਕਰ ਰਹੇ ਹਰੂ ਠੀਕ ਨਹੀਂ ਬੰਦਦਾ ਆਤਮਾ ਤੇ ਸੋਣ ਦੇ ਜਦ ਜੋ ਕੁਝ ਅਸੀਂ ਕਰਦੇ ਆ ਅਸੀਂ ਵੀ ਉਹਨੂੰ ਠੀਕ ਨਹੀਂ ਬੰਦਦੇ ਫਿਰ ਅਸੀਂ ਕਹਿੰਦੇ ਮੇਰੀ ਆਤਮਾ ਦੀਪੰਤੀ ਇਹ ਦੁਆ ਦੀ ਉੱਤਰ ਆਪ ਕੋ ਨਹੀਂ ਬਲ ਰਹੀ ਪਤਰ ਪੂਜਨ ਪਤਾ ਰੋ ਨਹੀਂ ਅਦਲੀਲੋ ਬਿਰਦੇ ਰੇ ਮਨ ਨਹੀਂ ਮੰਨ ਰਿਹਾ ਤੁਸੀਂ ਦੋਹੇ ਰੜ ਕੇ ਵੀ ਤਾਂ ਹੋ ਜਾਂਦੀ ਦੋ ਕਿਵੇਂ ਹੋਗੇ ਬਾਬਾ ਜੀ ਇੱਕ ਤਾਂ ਪ੍ਰਾਤਮਾ ਹੋਗੀ ਪ੍ਰਾਤਮਾ ਅਸੀਂ ਕਹਿੰਦੇ ਜਿਹੜੀ ਅੰਦਰਲਾ ਚਿੱਤ ਹੈ ਸਾਡਾ ਮੈਨੂੰ ਪਤਾ ਹੈ ਦੋਹੇ ਰਾੜੀ ਸਕਦੇ ਕਿਥੇ ਕੰਮ ਤੁਸੀਂ आत्मा के प्राण दोए कोई तो, दे। दे। दे। तो, तो कोई आदूल आप ऋषि है आत्म प्राणों को अपने रसायन करावे भी काम करते शरीर फैमत कोई फिर मज़बूर कोई किस्म नहीं जितना दो रहे उनना जलता पेट में रखदा काम करता नहीं हुंदा करता है नहीं करता काम परते सुभरीए काईकबीर पैसे समरो के दो ऐसे हम तो करते हैं करता है, है।, है।, है ज्यादा कहना भरिया आप को दर्द होती मैं करता ਮਜਬੂਰੀ ਕਰਕੇ ਆ ਤੋ ਵੀ ਉਹ ਆਪਣੇ ਦੌਰ ਸਾਂ ਨਹੀਂ ਕੀਤਾ ਹੈ ਨਹੀਂ ਮਨ ਵੀ ਜਵਾ ਉੱਥੇ ਕਰਦੇ ਹਾਂ ਉਹ ਫਿਰ ਸਿਚੁਏਸ਼ਨ ਬਾਹਰ ਦੀ ਕੋਈ ਅਸੀ ਹੁੰਦੀ ਹੈ ਉਹ ਮਨ ਹੈ ਵੀ ਦੋਏ ਨਹੀਂ ਜਾਂਦੇ ਅਸਾਂ ਜੋ ਕੰਮ ਕਰਨਾ ਮਜਬੂਰੀ ਆ ਉਹ ਕਿਉਂ ਹੋ ਰਿਹਾ ਵੀ ਜਦ ਦੋਏ ਉਹ ਜਿਹੜੀ ਮਜਬੂਰੀ ਉਹਦੀ ਪੋਜੀਸ਼ਨ ਹੁੰਦੀ ਫਿਰ ਮਜਬੂਰੀ ਦਾ ਫਿਰ ਪੂਰੀ ਮੈਂ ਦੱਸ ਤਾ ਮੈਂ ਕਰ ਦੱਸ ਅੰਤਰ ਪੂਜਾ بڑے ਕਤਹਿਬਾਂ ਸਾਨੂੰ ਤੁਰਕਾ ਪਾਈ ਮਜਬੂਰੀ ਬਸ਼ਰ ਚਾਉਂਦੇ ਨਹੀਂ ਉਹ ਸਿਚੁਏਸ਼ਨ ਬਣੀ ਹੋਈ ਆ ਸਿਚੁਏਸ਼ਨ ਬਚੀ ਕਰ 12ਵਾਂ ਕਰ ਛਾਉਦੇ ਵੀਰ ਹੀ ਕਰ ਰਹੇ ਨੇ ਰਾਜਾਉਦੇ ਵੀ ਕਰ ਲੋਕ ਕੇ ਪੂਜਾ ਵੀ ਕਰ ਕਤੇ ਬਾਹਰ ਜੋ ਪੜਦਾ ਹੈ ਉਹ ਪਰਦੀ ਜਾ ਰਿਹਾ ਫਰੂਦ ਉਸ ਨੂੰ ਦਿਖਾ ਕੇ ਕਰਦਾ ਝੀਰ ਬਚਾਰੇ ਨੂੰ ਲੋਹੇ ਦੇ ਤੱਕ ਹਾਂ ਪੂਜਾ ਦਿਖਾਉਣੀ ਜਾਂਦਾ ਪੂਜਾ ਦਿਖੰਦਾ ਤੋ ਡਰਾਇਡ ਨੇ ਇਹ ਤਾਂ ਮਤਲਬ ਰਾਜੇ ਤੋਂ ਖਰਾਬ ਪਰਦੇ ਤਰੀਕੋ ਰਾਜੇ ਤੋਂ ਖਰਾਬ ਹੋ ਗੋ ਖਬਰ ਅਰੇ ਭਾਈ ਆਤਮਾਰਾਮ ਨੇ ਪੂਜਨੀ ਦੂਜੇ ਆਤਮਾ ਹੋ ਗਿਆ ਮੈਨੂੰ ਆਤਮਾ ਤੇ ਕੋਬੋ ਦੇ ਕੇ ਕਰੀ ਜਾਓ ਠੀਕ ਹੈ ਠੀਕ ਹੈ ਕਲੀਅਰ ਹੋ ਆਤਮਾ ਹੋਣਾ ਮੈਨੂੰ ਆਤਮਾ ਆ ਵੀ ਸੋਧ ਇਹ ਕੇ ਲਾਭੋ ਗੱਲ ਮੈਂ ਦਾਤੂ ਜਰਾ ਤਾਂ ਆਤਮਾ ਨਹੀਂ ਹੈ ਇਹ ਇਹ ਪਤਾ ਪ੍ਰੋਬਲਮ ਕਿੱਥੋਂ ਹੋ ਗਈ ਡਿਜੀਟਲ ਸਮਝ ਕੇ ਚਲੇ ਆ ਵੀ ਇਹ ਅੰਤਰਾ ਆਤਮਾ ਵਾਲੀ ਆਵਾਜ਼ ਹੈ ਇਹ ਵੇਖੀ ਚੱਲਦਾ ਪੁੱਛਣਾ ਪਰਮਾਤਮਾ ਤੁਸੀਂ ਆਤਮਾ ਨਹੀਂ ਪੁੱਛਣਾ ਸੰਦੇਸ ਦਾ ਸੁਣਾ ਉਹ ਨਹੀਂ ਨਹੀਂ ਮੈਂ ਕਲੀਅਰ ਆਂ ਮੈਂ ਨਹੀਂ ਹੋ ਰਿਹਾ ਮੈਂ ਕਲੀਅਰ ਆ ਅੱਛਾ ਬੇਸਿਕਲ ਮੈਨੂੰ ਪਤਾ ਹੈ ਕਿਉਂ ਕੋਥੇ ਕੋਥੇ ਆਤਮ ਦਾ ਰਾਮ ਰਾਮ ਰਾਮ ਆਪਣਾ ਰਾਮ ਆਪਣਾ ਵੀ ਜੀ ਲੋਕ ਜਿਵੇਂ ਮੈਂ ਆਪਣਾ ਰਾਮ ਪੂਜਿਆ ਥਿਆ ਪਰਸਨਲ ਰਾਮ ਜਿਹੜਾ ਮੇਰੇ ਅੰਦਰ ਆਵੇ ਉਹ ਰਾਮ ਆਤਮ ਰਾਮ ਦਾ ਮਤਲਬ ਆਤਮ ਰਾਮ ਨਾ ਪੂਜੇ ਧੀ आत्म राम कहना अर्थ नहीं आत्म राम ने पूजा का पूजा दी कौन ने पूजा ये सवाल खड़ा है आत्म और ने पूजा सही वो आत्मा ये आत्मर राम की ਆਤਮਾ ਨੂੰ ਉਪਦੇਸ਼ ਆਤਮਾ ਜਿਹੜੀ ਹੈ ਉਹ ਰਾਮ ਦੀ ਰੂਜਾ ਨਹੀਂ ਕਰਦੀ ਇਹਦਾ ਸੇਵ ਆਤਮਾ ਰਾਮ ਤੋਂ ਆਪਣਾ ਰਾਮ ਇੰਨੀ ਆਤਮਾ ਅੰਦਰ ਕਰ ਬੈਠੇ ਕਰਮਾ ਰੋਣਾ ਆਹ ਲਓ ਉਪਦੇਸ਼ ਹੈ ਇੱਥੇ ਆਰਾਮ ਆਰਾਮ ਹੈ ਜਿਹੜਾ ਉਹ ਪ੍ਰੀ ਸੈਟ ਹੋ ਗਿਆ ਵੀ ਫਿਊਰਿਡਿਕ ਆ ਪ੍ਰਾਤਮ ਹੈ ਉੱਥੇ ਉਹਨੂੰ ਕਿਹਾ ਆਤਮਾ ਨੂੰ ਕਿਹਾ ਤੂੰ ਆਪਣਾ ਨਹੀਂ ਹੈ ਤਾਂ ਪ੍ਰੀ ਸੈਟ ਆਉਂਦਾ ਦਸ ਦਸ ਬੁੱਢਾ ਮੇਰੇ ਸ਼ਬਦਾਂ ਤੇ ਨਾ ਜਾਓ प्रातः ही राम है प्रातः को ही ता राम है पर प्रीजड़ थोड़ी है ये बच्चे कि जबो ये तो कुर्बानियों से पाई जो कुर्बानियों से भी सेट रही है बदल गया है हां बदल के वोने गुरु बन गया ਪ੍ਰੀਸੈਟ ਦਾ ਰਾਮੋ ਗਿਆੜਾ ਬਾਹਰ ਬੁੱਧ ਤੋ ਸਾਰੇ ਜੀ ਜੀ ਉਹ ਛੱਡੋ ਵੀ ਉਹਨੂੰ ਤਾਂ ਜੀ ਉਹੋ ਛੱਡੋ ਨਹੀਂਦਾ ਹੈ ਆਪਣੇ ਲਈ ਨਹੀਂ ਹੈ ਆਪਣੇ ਤਾਂ ਨਹੀਂ ਬਾਹਰ ਲੈਣਾ ਬਾਹਰ ਲੈ ਕੇ ਉਹਦੀ ਜਗ੍ਹਾ ਅਗਰ ਲਈ ਇਹ ਕੁਰਬਾਨ ਦੇ ਉੱਤੇ ਚੱਲੇਗੇ ਜਿਹੜਾ ਜੇ ਅਸੀਂ ਬੱਚੇ ਨੂੰ ਪੜਾ ਦੇਵਾਂਗੇ ਫ੍ਰੀ ਸੈੱਟ ਪਹਿਲੇ ਹੀ ਇਹ ਵੱਡ ਜਾਊਗਾ ਫਿਰ ਉਹ ਹੋਊਗਾ ਜੈਸੀ ਉੱਪਜੀ ਪੇੜ ਤੇ ਜੈਸੀ ਦੂਹੇ ਫਿਰ ਉਹਦਾ ਫ੍ਰੀ ਜਿਹਦਾ ਸਿੱਧਾ ਹੀ ਇਹ ਵੱਡਦਾ ਹੈ ਪੀਰਾ ਇਸ ਦਾ ਬਪੜਾ ਪੂਜੇ ਰਲਾ ਤੋਂ 8 ਸਾਲ ਦੀ ਉਮਰ ਤੇਦਾ ਤੋਂ ਵੱਡ ਜਾਊਗਾ 6 ਸਾਲ ਦੀ ਉਮਰ ਤੇ ਕੇ ਆਉਂਦਾ ਇਹਦਾ ਫ੍ਰੀ ਸੈਟੇ ਵੱਡ ਗਿਆ ਸਿੱਧਾ ਮਸਲ ਇਹ ਹੈ ਉਹ ਜਿਹੜਾ ਸੀ ਪ੍ਰਾਤਮਾ ਉਹ ਚੇਤੇ ਆ ਜਾਂਦਾ ਹੈ ਜਾਂ ਤੇ ਕੁਝ ਹੋਰ ਹੈ ਸੈਟ ਬਦਲ ਕੇ ਰੱਖਣਾ ਕੁਝ ਹੋਰ ਹੈ ਦੀ ਉਦੀ ਜਗ੍ਹਾ ਹੋ ਉਹ ਪਦਲਣਾ ਸਕਦਾ ਸਹੀ ਵੀ ਤਾਂ ਹੋ ਹੋਇਆ ਸਹੀ ਵੀ ਹੋ ਸਕਦਾ ਪਰੀ ਸੜ ਉੱਪਰ ਲਾ ਦੇ ਪਰੀ ਸੜ ਸਿੱਧਾ ਹੀ ਸੀ ਬਹੁਤ ਸਹੀ ਸੀ ਫਿਰ ਉਹ ਬਦਲਦਾ ਉਹ ਕਹਿੰਦਾ ਮੈਂ ਨਹੀਂ ਬਦਲਦਾ ਹੁਣ ਵੱਡਾ ਫਿਰ ਬਦਲਦਾ ਬੰਦੀ ਬੰਦੀ ਸ਼੍ਰੀ ਗੋਪਾਲ ਆਲ ਜਾਲ ਨਹੀਂ ਮੈਂ ਹੁਣ ਪੜ ਲੈਣਾ ਜੋ ਪਹਿਲਾਂ ਤੇ ਪੜਾਇਆ ਉਹ ਪੜਾ ਬਬਾਈ ਸੱਚ ਵਸੈ ਚਿੱਤ ਠਾਕੁਰ ਸੱਚ ਵਸੈ जे ਦੁਰ ਗਿਆਨ ਸਮੋਈ ਸਮੋਈ ਹੈ ਹਾਂ ਚਤ ਦੇ ਵਿੱਚ ਠਾਪ ਰਹਿਣਾ ਸਾਤ ਸਰੂਪ ਠਾਪ ਰਿਹਾ ਬਸ ਜਦ ਤਾਂ ਬਾਤ ਹੈ ਜੇ ਦੁਰ ਗਿਆਨ ਸੁਗੋਇਆ ਜਾਵੇ ਪਹਿਲਾ ਇਹਦੇ ਵਿੱਚ ਕਿਉਂ ਸੁਗੋਇਆ ਜਾਵੇ ਪਹਿਲਾ ਪੂਰੇ ਸ਼ਹਿਰ ਦਾ ਗੰਧ ਇਸੇ ਵਿੱਚ ਪਿਆ ਪੁਰ ਗਿਆਨ ਨਾਲ ਝਾੜੂ ਮਾਰਿਆ ਜਾਵੇ। ਭਲੇ ਤੇ ਪਟਕੇ ਦਾ ਹਨ ਬਾਹਰ ਘਟਾਇਆ ਜਾਵੇ। ਜਿਹੜੇ ਫਿਰ ਆ ਕੇ ਉਹ ਮਤਲਬ ਜੇ ਤੂੰ ਮੈਂ ਜਿਤ ਕਿੱਥੇ ਚਿਤ ਮਹਿ ਪਤਾ ਹੈਗਾ ਕਿ ਆਏ ਉਸਿਆਰੀ ਆਹੋ ਜਿਤ ਵਿੱਚ ਹੈ ਚਿਤ ਮਹਿ ਠਾਕੁਰ ਸੱਚ ਵਸਿਆ ਠਾਕੁਰ ਜਿਤ ਜਿਤ ਨਾ ਨਹੀਂ ਵਸਣੋ ਸ਼ਬਦ ਗੁਰੂ ਨੇ ਵਸਲਾ ਕੇ ਗਿਆਨ ਸਮਝੇ पैदा होगा गैस होगा सوج्या पहला सوج्या ताही हो बद्रू का यानी जदों रासव का हरदा पे تجيਊਗਾ फेरो ते पलट होगा हो पानी सुकाजेवे धरती विच गीली धरती होयो जद बीज बीजियो पाड़ी धरती तो भी चला जावे तांके जम होगा ਆ ਕੋਈ ਉਹ ਆਣਾ ਚਿੱਤ ਵਿੱਚ ਆਈ ਵਾਰੀ ਚਿੱਤ ਨੂੰ ਠਾਕੁਰ ਕਹ ਦਿੰਦੇ ਨੇ ਆਪਾਂ ਹੁਣ ਚਿੱਤ ਵਿੱਚ ਠਾਕੁਰ ਬਣੋ ਦੋਈ ਜਾਂ ਫੇਰ ਜਿਹੜਾ ਸਾਥੂ ਵਰਗਾ ਠਾਕੁਰ ਹੋਰ ਥੱਲੇ ਦਾ ਜਿਹੜਾ ਹੁੰਦਾ ਕੋ ਡੇ ਆ ਫਿਰ ਨਾ ਵੱਡਾ ਅਸਰ ਵੱਡਾ ਹੁੰਦਾ ਵੱਡੇ ਦਾ ਉਹ ਤਾਂ ਬਸ ਨਾ ਉਸ ਤੇ ਜਾਂਦਾ ਫੜੇ ਦੋਨੋਂ ਦੇ ਸਾਬ ਵਾਰ ਡਟ ਅਮਾਨ ਦਾ ਖਤਮ ਹੋ ਗਿਆ ਉਹਦਾ ਫਿਰ ਠਾਗਰ ਬੰਦਾ ਨਾ ਲੱਗਦਾ ਲਜ ਘਟੜ ਬਸ ਇਹਦਾ ਰਹੂਗਾ ਇਹੋ ਉਨੇ ਵੀ ਦਾ ਗਾਹਕ ਸੰਪ੍ਰਗਰਾਹ ਜਿੱਥੇ ਉਹ ਨਹੀਂ ਜਾਣਾ ਕਿ ਕਿਹੜੇ ਠਾਕਰ ਦੀ ਕਹਿੰਦੇ ਚਿੱਤ ਦੀ ਗੱਲ ਆ ਗਈ ਤਾਂ ਨਾਨਕ ਦਾ ਦਾਸ ਸ੍ਰੀ ਬਾਸੂ ਜਿਹੜਾ ਆਤਮ ਤੂ ਦਾ ਆਤਮ ਹੈ ਜਿਹੜਾ ਸ੍ਰੀ ਵਾਸਦੇਵ ਹੈ ਉਹਨੂੰ ਰਿਵਾਸ ਦੇਣ ਵਾਲਾ ਕ੍ਰਿਸ਼ਨਾ ਪਿਉਰੀ ਹਰ ਆਤਮਾ ਨੂੰ ਰਿਵਾਸ ਦੇਣ ਵਾਲਾ ਆਪਣੇ ਚੜ੍ਹਦੋਸ ਉਹਦਾ ਨੂੰ ਵਾਸ ਦੇ ਵਾਸਦੇਵ ਸਰਬਤਰਮ ਪੂਰਨ ਗਤੁ ਭਾਇ ਉਹੜਾ ਗਤੁ ਭਾਇ ਪਰ ਆਤਮਾ ਨੂੰ ਦਵਾਸ ਦੇਣ ਵਾਲਾ ਆਤਮੰਦਗਰਤੀ ਵਾਲਾ ਆਤਮਾ ਨੂੰ ਆਤਮਾ ਵਾਲਾ ਹਾਂ ਵਾਲਾ ਬਸੂੜ ਵਾਲਾ ਟਕੌਰ ਹੈ ਵਾਹ ਨੂੰ ਬਸੂਰੇ ਆਤਮਾ ਸ੍ਰੀ ਬਾਸੁ ਨੇ ਘਰ ਬਸਣਾ ਜੀ ਨੇ ਆਪਣੇ ਘਰ ਜੋ ਨੂੰ ਬਸੋਣਾ ਵਾਅਦਾ ਆਪਣੇ ਘਰ ਦੀ ਜਗਾ ਰੇੜੀ ਪੰਕਤੀ ਸ਼ੁਰੂ ਹੁੰਦੀ ਹੈ ਉੱਥੇ ਇੱਕ ਕ੍ਰਿਸ਼ਨ ਆ ਦੇਵ ਦੇਵਾ ਦਾ ਆਤਮਾ ਆਤਮਾ ਬਾਸੂ ਦੇ ਵਸਿਆ ਜੇ ਕੋ ਪਿਓ ਉਹ ਹੀ ਸ਼੍ਰੀ ਬਾਸੂ ਪ੍ਰਿਸ਼ਦ ਨਹੀਂ ਸਰਬ ਦੇਵ دیਵਾਨ ਤਾਂ ਆਤਮਾ ਉਥੇ ਦੇਵ دیਵਾਨ ਤਾਂ ਆਤਮਾ ਹੈ ਆਤਮਾ ਅਸੂਦੇਵ ਅਸੇ ਜੇ ਕੋਈ ਜਾਣ ਪਏ ਉਥੇ ਪ੍ਰੇਸ਼ਨ ਇਹਨਾਂ ਲੱਗ ਕੇ ਸਰਬ ਕ੍ਰਿਸ਼ਨ ਸਰਬ ਦੇਵਾ ਇਹ ਸਾਰੇ ਕ੍ਰਿਸ਼ਨ ਕਿਤੇ ਕ੍ਰਿਸ਼ਨ ਸੇ ਕੀ ਟੋਟੇ ਬੋਟੇ ਬੁੜਾਈ ਜਿਹੜਾ ਮਾਨਾ ਕ੍ਰਿਸ਼ਨ ਕਾਲਨ ਕਾਲਨ ਰੂਪੀ ਸ਼ੁਰੂ ਇਹ ਸਾਰੇ ਜੀਵ ਕ੍ਰਿਸ਼ਨ ਦਾ ਹੀ ਅਵਤਾਰ ਹੈ। ਆ ਲੱਗਨ। ਕੀਟ ਦੇ ਕਿਤੇ ਕ੍ਰਿਸ਼ਨ ਤੇ ਕੀਟ ਕੋਟੇ ਬਣਾਏ। ਕੀੜੇ ਬਣਾਏ। ਇਹਦਾ ਉਹਨਾਂ ਸਰੀਰ ਨਾਲ ਜਿਹੜਾ ਜੁੜਿਆ ਹੈ ਕੀਟ ਕਿਉਂ ਗਿਆ ਨਾ ਸਰੀਰ ਨਾਲ ਜਿਹੜਾ ਉਹ ਕੀਟ ਹੈ? ਰਾਹ ਨੂੰ ਕੀਟ ਹੈ। ਇਤੋ ਪਰਪਰ ਉਹ ਦੇ ਪ੍ਰਾਤਮ ਰਾਮ ਇਹ ਕ੍ਰਿਸ਼ਨ ਰਾਮ ਰਾਮ ਕ੍ਰਿਸ਼ਨ ਦੋਹਾਂ ਦੀ ਭਗਤੀ ਹੈ ਗੁਰਬਾਣੀ ਚ ਤਰੀਛੇ ਰਾਮ ਦੀਆਂ ਪੂਜਾ ਕਰਨੀ ਦੋ ਭਗਤੀ ਨੇ ਬਸ ਦੋ ਭਗਤੀ ਬੁੱਧੀ ਨਾ ਸਾਡੀ ਜਦ ਦੋ ਭਗਤੀ ਭਗਤ ਪਤੀ ਜਮਨ ਜੁੜੜ ਬੁੱਧੀ ਨਾ ਦੋਹਾਂ ਬੋਲੀ ਹੋ ਜਾਂਦੀ ਬੋਲੀ ਹੋ ਜਾਂਦੀ ਉਹ ਕਰਦੇ ਨੇ ਬੋਲੀ ਹੋ ਜਾਂਦੀ ਪਰ ਦੋਹਾਂ ਨਾਲ ਜੋੜਦੇ ਦੋਹਾਂ ਨਾਲ ਜੋੜਦੇ ਤੇ ਤਾਂ ਇਹਨਾਂ ਤਾਂ ਚੁਬਨ ਖੁੱਜੇ ਉਹ ਕਿਰਤ ਭਗਤੀ ਮਨ ਜੋੜ ਉਹ ਉਹ ਰੰਗ ਬਰਾਂਤੀ ਹੋਗੀ ਬਲੀਏ ਤੇ ਲੋਏ ਹੋਗੇ ਇਹ ਲੋਏ ਹੋਗੇ ਆਉਣਾ ਰੁਗਾ ਤਾਂ ਗਲਬੈ ਜਾਣਾ ਉਹਨੇ ਦੋ ਬਣਾਤੀਆਂ ਟੋਟ ਉਥੇ ਜੱਬ ਨੇ ਕ੍ਰਿਸ਼ਨ ਦੇ ਵਿਚਾਰਤਾ ਜੱਬ ਨੇ ਜੱਬ ਤੋਂ ਮਾਰ ਜੇ ਮਾਣਾ ਮਨ ਜੋ ਜੋ ਤਾਰਾ ਪੈਦਾ ਹੁੰਦੀ ਹੈ ਜਿੰਦੀ ਜੋ ਉਤਾਰਾ ਹੈ ਉਹ ਜਬਨ ਇਹ ਦੇਖ ਰੋ ਜੀ ਉੱਥੋਂ ਇਹ ਕ੍ਰਿਸ਼ਨ ਉੱਤਾਰ ਸਕਦੇ ਇਹ ਕ੍ਰਿਸ਼ਨ ਸੰਨ ਦੇਵ ਦੇਵ ਦੇਵ ਦੇਵਾ ਕਿਉਂ ਕਹਿੰਦਾ ਦੇਵਤਾ ਕੌਣ ਹੈ ਦੇਵ ਕਿਹਨੂੰ ਕਹਿੰਦਾ ਕਹਣਾ ਲੱਗਿਆ ਉਹ ਜਿਹੜਾ ਮੁਕਤ ਹੈ ਉਹ ਦੇਵ ਕੰਨਾ ਨਹੀਂ ਲੱਗਿਆ ਉਹਨੂੰ ਮੁਕਤਾ ਕਰਨ ਹਾਂ ਉਹ ਕੋਈ ਜਿਹੜਾ ਮੁਕਤਾ ਹੈ ਉਹ ਦੇਵ ਦੇਵ ਦੇਵਾ ਦੇਤਾਰੀ ਨਹੀਂ ਅੰਤਰ ਦੇਵ ਉਹ ਦੇਵ ਮੁਕਤਾ ਤੇ ਦੇਵ ਅਗਰਿ ਮਨੇ ਆਏ ਦੇਵਾ ਦੇਤਾਰੀ ਹੈ اچھا ਦੇਵਾ ਸਾਰੇ ਜੇਤ ਮਾਨਸ ਤੇ ਦੇਵਤੇ ਕੀਏ ਜਿਹੜਾ ਦੇਵਤਾ ਹੋਊਗਾ ਮਾਨਸ ਤੋਂ ਹੋ ਗਿਆ ਉਹੀ ਤਰੂਗਾ ਨਾ ਉਸੇ ਨੇ ਬਸਣ ਦੀ ਗੱਲ ਹੈ ਜਿਹੜਾ ਦੇਵਤਾ ਹੋਇਆ ਹੈ ਕਿ ਜਿਹਨੂੰ ਬਸਣ ਦੀ ਇੱਛਾ ਹੀ ਨਹੀਂ ਹੈ ਉਹਨੇ ਕੀ ਮਤਲਬ ਉਹਦੇ ਤਾਂ ਗੱਲੇ ਬਾਹਰ ਤੇ ਸੰਸਾਰ ਨੂੰ ਦੁੱਖ ਸਾਗਰ ਬਣ ਕੇ ਇਹ ਤਾਂ ਛਤਕਾਰਾ ਪਾਉਣ ਦੀ ਇੱਛਾ ਹੋਈ ਜਿਹਨਾਂ ਦਾ ਜਿਹੜੀ ਤੀ ਲੱਗਿਆ ਉਹਨਾਂ ਦਾ ਦਰੋਂ ਉਹਦੇ ਯਾਦ ਕਰੀਏ ਮੇਰਾ ਸਾਰੇ ਦੇਵਾਂ ਦੇ ਵਿੱਚ ਇੱਕ ਕ੍ਰਿਸ਼ਨ ਦਾ ਰੂਪ ਹੈ। ਅੱਛਾ ਇੱਕ ਕ੍ਰਿਸ਼ਨ ਅਗਾ ਸਰਬ ਦੇਵਾਂ। ਸਾਰਿਆਂ ਜੀ ਹੈ। ਇਹਨੂੰ ਲੋਹਾ ਕਿਹਾ ਹੈ ਲੋਹਾ। ਦੇਵ ਦੇਵਾ ਦੇਵ ਦੇਵ। ਜਿਹੜਾ ਦੇਵਾ ਗਿਆ। ਹਾਂ। ਦੇਵ ਦਿਵਾਤ ਆਤਮਾ। ਉਹ ਆਤਮਾ ਜਿਹੜੀ ਇਹਨਾਂ ਨੂੰ ਪਈ ਹੋਈ ਹੈ, ਰੋਸ਼ਨੀ ਜੋ ਮਿਲੀ ਹੋਈ ਹੈ, ਉਹ ਦੇਵ ਅੰਦਰ ਇਹਨਾਂ ਹੋਈ ਹੈ ਸਾਰਿਆਂ ਨੂੰ। ਦੇਵ ਦਿਵਾਤ ਆਤਮਾ। ਰੋਸ਼ਨੀ ਨਹੀਂ ਹੁੰਦੀ ਚੰਦਰਮੇ ਕੋਲ ਆਪਣੀ ਉਹ ਹਜ਼ੂਰੀ ਤੋਂ ਹੀ ਮਿਲਦੀ ਹੈ ਥੱਲੇ ਤੋਂ ਹੀ ਮਿਲਦੀ ਹੈ ਬਾਕੀ ਜਿਹੜੀ ਇਹਦੀ ਆਤਮਾ ਦੇ ਵਿੱਚ ਜੋਤ ਮਿਲੀ ਹੈ ਆਤਮਾ ਰੂਪੀ ਇਹਨਾਂ ਦਾ ਆਪਣਾ ਕੁਝ ਨਹੀਂ ਆ ਉਹ ਉਹ ਦੇਪੁੜਾ ਆਂ ਦੇਵ ਤੋਂ ਹੀ ਦੇਵਤਾ ਪਰ ਹੈ ਹੈ ਦੇਵਤੇ ਇਹ ਨੂੰ ਰੋਸ਼ਨੀ ਦਿੱਤੀ ਹੋਈ ਹੈ। ਕਹਾਂ ਦੇਵਤੇ ਤੂੰ ਹੀ ਦਵਾਈ ਹੋਈ ਹੈ ਰੋਸ਼ਨੀ। ਸੇਵ ਦੇ ਆਤਮਾ ਨੂੰ ਜਿਹੜੀ ਮੁਕਮਲ ਦਵਾਈ ਹੋਈ ਆਪਣੇ ਸਰਬਾਤ ਇਹ ਹੁਕਮ ਕੀ ਹੈ। ਜੋ ਵੀ ਇਹਦੇ ਕੋਲ ਪਾਵਰ ਸ਼ਕਤੀ ਹੈ ਰੋਸ਼ਨੀ ਇਹਨੂੰ ਦਵਾਈ ਹੋਈ ਹੈ ਦੇਵ ਤੋਂ। ਇਹਨੂੰ ਥੋੜੀ ਜਿਹੀ ਰੋਸ਼ਨੀ। ਆਤਮਾ ਵਾਸudevਸ ਆਸudevਸ ਵਾਸਦੇਵਸ ਆਤਮਾ ਦਾ ਜਿਹੜਾ ਵਸੇਬਾ ਹੈ ਆਤਮਾ ਦਾ ਟਿਕਾਉ ਹੈ ਵਾਸudevਸ ਨਿਵਾਸ ਹੈ ਉਹਦਾ ਨੂੰ ਵਾਸਦੇਵਸ ਆ ਤੁਲਕ ਸੋਲ ਵਾਲੇ ਦਾ ਨੂੰ ਵਾਸਦੇਵਸ ਅਟਾ ਗੁਰੂ ਬਾਪ ਹੋ ਗਿਆ ਜਦੋਂ ਉਹ ਤੋਂ ਰੋਸ਼ਨੀ ਪੈਦਾ ਹੋਈ ਆ ਬਾਪੇ ਹੋ ਗਿਆ ਗੋਬਰ ਗੋ ਰੋਸ਼ਨੀ ਉਹ ਤਾਂ ਬਣੀ ਹੋਈ ਹੈ ਗੋ ਰੋਈ ਬਾਪੇ ਹੋ ਗਿਆ ਕ੍ਰਿਸ਼ਨ ਦਾ ਬਾਪ ਕਿਹਾ ਵੀ ਜਿੱਤਾਂ ਕ੍ਰਿਸ਼ਨ ਉਡੀ ਪਹਿਲਾਂ ਲੋਪ ਪ੍ਰਚਲਨ ਤੇ ਗੱਲ ਐ ਚੱਲੇ ਕਿਉਂ ਲੇਤੀਆਂ ਵੀ ਗੱਲ ਕੀ ਲੋਰਸੇ ਲਿਖਣ ਕੀ ਲੋਰਸ ਉਹਨਾਂ ਦਾ ਕੀ ਸਵਾਰਤਾ ਸੀ ਇੱਥੇ ਕੀ ਸਵਾਰਤਾ ਜੋ ਚੀਜ਼ ਸੋਦੀ ਸੀ ਜੋ ਚੀਜ਼ ਕਹੀ ਸੀ ਉਹ ਤਾਂ ਸਮਝ ਆਈ ਨਹੀਂ ਮੈਂ ਪਹਿਲੇ ਸਵਾਲ ਕੀਤਾ ਸਾਡੇ ਜੀ ਕ੍ਰਿਸ਼ਨ ਦਾ ਦੇਖੋ ਅੱਗੇ ਪਿਛੋਟਿਆ ਸਾਬ ਨਹੀਂ ਕਰ ਸਕੂੀ ਗੱਲ ਇਹਦਾ ਅਰਥ ਆ। ਉਹ ਤਾਂ ਮੁੱਕਰ ਗਿਆ ਜੇ ਉਹ ਕਹਿੰਦਾ ਤੂੰ ਆ ਕਰ। ਸਿੱਧੇ ਜਾ ਫਦੇ ਦੇ ਗੱਲ ਦਿੰਦੇ ਕਹਿੰਦੇ ਕ੍ਰਿਸ਼ਨੀ ਹੈ। ਸਾਰੇ ਦੇਗਾਂ ਦਾ ਬੜਾ ਦੇਗ ਹੈ ਬਾਪ ਜੀ ਅੱਗੇ ਆਤੀ ਕੇ ਹਾਂ ਗੁਰਮੁਖੀ ਤੋਂ ਲੈ ਕੇ ਗੁਰਮੁਖੀ ਜਿਹੜੀ ਵਿਵੇਕ ਬੁੱਧੀ ਹੈ ਗੁਰਮੁਖੀ ਦਾ ਮਤੁਦ ਦਾ ਵਿਵੇਕ ਹੈ ਇਸ ਰਿਸ਼ੀ ਇਹ ਗੁਰਮਖੀ ਲ ਉਹ ਕਦੋਂ ਆ ਵਰਤੇ ਜਦੋਂ ਕੋਈ ਬੇਪੂਤੀ ਪ੍ਰਗਟ ਹੋ ਜਾਂਦੀ ਹੈ ਉਸ ਤੋਂ ਆਦਿ ਦਾ ਰੋਟੀ ਜਾਂਦਾ ਫਿਰ ਇਸਤਰੀ ਦਾ ਚੱਲਦਾ ਸਤੋ ਉਤ ਤੋਂ ਇਸਤਰੀ ਦਾ ਰੋਣ ਲੱਗਦਾ ਲੱਗ ਪੈਂਦਾ ਆਦਿ ਤੇ ਕਿੰਨਾ ਆਲਪ ਨੂੰ ਖੁਸ਼ਾੜ ਪਰ ਉਸ ਸੁਖਵਾ ਹੈ ਇਹ ਤੇਰੀਆ ਉਹਨਾਂ ਤੇ ਹੈਲੋ ਬਰਬੋ ਕੀ ਮਾਨ ਸਮਝਾਈ ਹੈ ਜਾਨੀ ਅਲਪ ਸੁਖ ਸੁਖ ਛਾੜ ਜਦੋਂ ਦੁਨਿਆਵੀ ਸੁਖਾਂ ਤੋਂ ਤਿਆਗ ਕਰ ਦਤਾ ਸਤੋ ਹੋ ਤੇ ਕਿ ਡਰ ਆਉਂਦਾ ਇਹਨਾਂ ਸੁਖ ਤੋਂ ਕਰਨਾ ਇਹ ਹੈਗਾ ਮਿੱਠੀ ਸੁਖ ਦੁਦਰਨ ਤੇ ਜਾਏ ਹੰਡਲ ਵੜ ਕੇ ਰੱਖੀ ਹੈ ਜੈ ਇਹਨਾਂ ਨਾਲ ਜੈਰ ਦੀ ਬਾਹਰ ਨੇ ਸੁਖੜੇ ਬਾਹਰ ਨੇ ਸੁਖੇ ਜੈਰ ਦੀ ਉਦੜਾਂ ਦੇ ਹੰਡਲ ਵਾੜ ਕੇ ਰੱਖੇ ਹਨ ਤੇਰੀਆਂ ਹੰਡਲ ਵਾੜ ਇਹਨਾ ਤੋਂ ਬਚ ਕੇ ਰਹਿਣ ਦੀ ਗੱਲ ਜੈ ਸੋਚਦਾ ਅਲੁਖ ਸੁਖ ਛਾੜ ਪਰਮ ਨੇ ਹੀ ਉਹ ਸਮਝਾਇਆ ਹੈ ਗੁਰਮੁਖੀ ਉਪਤੀ ਤੋਂ ਗੁਰੂਪਤੀ ਸਮਝਾਇਆ ਅਤਪਰੰਪਰਮ ਯਾਨੀ ਗੁਰਮਤਿ ਦੇ ਘਰ ਜਿਹੜੀ ਕੋਲਣੀ ਹੈ ਉਹ ਬਾਤ ਨੂੰ ਸਮਝਾ ਸਕਦਾ ਹੈ ਨਾ ਮਦਦ ਜੇ ਤੇ ਸੈਨੇ ਮਨ ਨੂੰ ਉਪਤੀ ਆਵੇ ਤਾਂ ਗੁਰਮਤਿ ਸੋਚੀ ਪੂਰੀ ਸੋਚੀ ਪੂਰੀ ਸੋਚੀ ਗੁਰਪਤੀ ਪੂਰੀ ਸੋਚੀ ਜਾ ਰੋ ਵੇ ਬੋਲ। ਕਰਨ ਦਲੀਲਾ ਮੋਰ ਕੋਈ ਈਡੀਆ ਜਿਹੜਾ ਬਾਹਰ ਨਿਕਲਣ ਨੂੰ ਬਹੁਤ ਮਾਰ ਕੇ ਪਾਉਂਦਾ। ਮੇਰੇ ਕੋਈ ਈਡੀਆ ਦਲੀਲਾ ਦੇ ਦੁਨੀਆ ਦੀ ਕੋਈ ਗੱਲ ਨਹੀਂ ਜਾਨਦਾ। ਦੁਨੀਆ ਬਹਿ ਲੱਗੀ ਫਿਰਦਾ। ਜਿੰਦਗੜਾ। ਗੁਰਮੁਖ ਮੈਂ ਸਮਝਾਈ ਹੈ ਆਤਮ ਰਾਮ ਵਿਚਾਰ। ਆਤਮ ਰਾਮ। ਆਤਮ ਰਾਮ ਵਿਚਾਰ। 50 ਆਇਆ ਆਤਮ ਰਾਮ ਵਿਚਾਰ ਕੀਤੀ ਹੈ। ਇਹਨੇ ਆਪਣੀ ਉਹ ਬਜਾਰ ਕੀਤੀ ਆਤਮ ਨੇ ਨਾਮ ਦੀ ਵਿਚਾਰ ਸਹੀ ਕੀਤੀ ਹਾਂ ਕਿਸੇ ਦੇਵੀ ਦੇਵਤੇ ਦੀ ਆਤਮ ਵਿਚਾਰ ਕੀਤੀ ਆਤਮ ਆਤਮ ਨੂੰ ਆਤਮ ਔਰ ਰਾਮ ਦੋ ਰੂਪ ਜਾ आत्म प्लस राम आदम चीर प्राप्तो चीतो पण आदम चीदया वर्दी दया फिर रा, राम चीदया तर प्राप्त चीदया दोहान ही खोज जडी है दोहान नु समझ के ही मत पहला मते अपनाम समझिया फिर जितो पैदा हुता ओनु समझिया तावान ने समझिया तावान ने छड्या संसार वत सुता ਕਿਹੜੇ ਦੇ ਅંદર ਸੰਸਾਰ ਦੀ ਭੁੱਖ ਪਦਾਰਥਾਂ ਦੀ ਕਈ ਹੈ ਅਰਵਾਦੀ ਭੁੱਖ ਕਹਿਦਾ ਕੋਈ ਬੁੱਢਾ ਕੱਢੀ ਬਸ ਕਹਦਾ ਜਿਹੜਾ ਅਸੀਂ ਕਹਿੰਨਾ ਨਾ ਰੱਬ ਨੂੰ ਮਿਲਣਾ है ਰੱਬ ਨੂੰ ਖੋਜਣਾ ਹੈ ਰੱਬ ਨੂੰ ਪਾਉਣਾ ਗਲਤ ਹੈ ਕਹਦਾ ਗੁਰਬਾਣੀ ਵੀ ਉਸ ਗੁਰਬਾਣੀ ਤੋਂ ਬੰਦੀ ਇਹ कि ਤੇਰਾ ਗੁਦੀ ਗੱਲ ਜਿਹੜੇ ਰੱਬ ਨੂੰ ਰੱਬ ਇਹ ਕਹਿੰਦੇ ਨੇ ਉਹਦਾ ਦਰਦ ਇਹ ਬਲੂ ਚਾ ਹੋਵੇ ਕੋਈ ਤੇ ਸੁੱਚ ਹੋ ਜਾਵੇ ਕਹੜੇ ਵਾਲੇ ਤੇਰੇ ਰਹਿ ਸੁਭਾਈ ਵੱਡੇ ਮੇਰੇ ਸਾਹਿਬਾ ਕਹਿ ਰਹੇ ਮੀਰਾ ਗੋਲੀ ਵੀਰਾ ਕੋਈ ਨਹੀਂ ਜਾਣੇ ਤੇਰਾ ਕਿਸ ਤੱਕ ਚੜਦੀ ਤੇ ਕੋਈ ਜਾਣਦਾ ਹੀ ਨਹੀਂ ਇਹਦਾ ਤੇ ਉਹ ਲੋਕ ਦੀ ਕੋਈ ਗੱਲ ਨਹੀਂ ਹੈ। ਇਹ ਜਿਹਾ ਦਾ ਗਿਆਨ ਹੈ ਤੇ ਲੋਕ ਦਾ ਤੇ ਲੋਕ ਕੀ ਤੇ ਲੋਕ ਆਤਮਾ ਇਫਰਾਤ ਬਣਿਆ ਹੋਇਆ ਹੈ। ਫਿਰ ਉਹ ਤੋਂ ਹੈਗੀ ਤੇ। ਭਈ ਦੇਖ ਰਿਹਾ ਲੱਗਦਾ ਸੀ ਇਹ ਦੁੱਧ ਇਹ ਦੁੱਧ ਉਪਰੇ ਖਾਣਾ ਮਨਾਂ ਜਿੰਨੂੰ ਸਮਝ ਆਤਮਾ ਗਿਆ ਉਹਦੇ ਵਾਸਤੇ ਲਫਜ ਗਰਵਾਣੀ ਨੂੰ ਸਰ ਪ੍ਰਾਪਤ ਮੈਂ ਹਾਂ ਬਸ ਅੱਜ ਤੇ ਪਹਿਲੂ ਗਿਆ ਦਾ ਬਾਬਾ ਜੀ ਉਹ ਸਮਝ ਆਤਮਾ ਨ ਲਫਜ ਆਤਮਨ ਦਾ ਆਤਮਨ ਨਾ ਵਜਾ ਉਹ ਸ਼ੋਰ ਆਤਮਾ ਬਣਾਦਾ ਨਾ ਦੇਖੀ ਗਿਆ ਦੋ ਰੂ ਬਣਾਦੇ ਉਹ ਦੇਖ ਦੋ ਰੂ ਬਣਾਦੇ ਕਹਿੰਦਾ ਮਨ ਬਣਾ ਲੇਤਾ ਜਾਂ ਮਨ ਬਣਾਦਾ ਇਹ ਆਤਮਾ ਉੱਥੇ ਵੀ ਜਿਹੜੇ ਸਰਕਾਰੀ ਪਾਸੇ ਆਤਮਾ ਨੂੰ ਗਿਆ ਜਾਂਦਾ ਪਰ ਜਿਹੜਾ ਬਾਬਾ ਨੂੰ ਆਤਮਾ ਬਣਿਆ ਪਰ ਜੇ ਆਪਾਂ ਸਮਝਣਾ ਨਾ ਇਹ ਛੋਟਾ ਗੱਲ ਉਹਨਾਂ ਨੇ ਕਿਹਾ ਇਹਨਾਂ ਨੇ ਅੰਡਰਸਟੂਡ ਨਾ ਨਾ ਨਾ उन्होंने के है एडियोन को दादी जान के गया ना तो आत्मा के मतलब क्यों है तो पाड़ी पाड़ तय रेबीर के है जे वो आत्मा रोही प्राप्तवन गायब ना कर आज फिर कर सकू रब निर्मल सबसे फिर भी रो रब प्रबल जरूरी सी ये गल आत्मागत कोप्त करनी आत्मागत जे आत्मा ऊपर ਆਤਮਾ ਨੂੰ ਵੀ ਕੋਈ ਹੈ ਹਾਂ ਫਿਰ ਤਾਂ ਨਾਲ ਗੱਲੇ ਆਣੀ ਆਦਮੀ ਤੇ ਲਾਗੇ ਰੁਕੜਾਇਆ ਬ੍ਰਹਮ ਤੇ ਘੜਾ ਦੋ ਵੀ ਪਰਮਰਿਛੜਤਾ ਹਾਂ ਅ ਬ੍ਰਹਮ ਛੜਤਾ ਬ੍ਰਹਮ ਨਾਲੇ ਆਤਮਾ ਛੜ ਕੇ ਆ ਤੁਮਾ ਸੈਂਡ ਕਰਾ ਕੇ ਮੰਨਦੀ ਸਟੈਂਡ ਕਰਾਤਾ ਬਾਕੀ ਜਿੰਦੇ ਸਟੈਂਡ ਕਰਾਤਾ ਬਾਸ ਦੇ ਦੇਤਾ ਨਹੀਂ ਸਟੈਂਡ ਇੱਕ ਬ੍ਰਹਮਾ ਇੱਕ ਬ੍ਰह्म ਬੋਧ ਹੀ ਸਾਤ ਔਰ ਕੋਈ ਪਤਾ ਨਹੀਂ ਦਾ ਫੜੀ ਆ ਉਹਨੇ ਤਾਂ ਫੜੀ ਆ ਸਿਖਾਂ ਨੇ ਸਮਝਦੀ ਹੋਈ ਗੱਲ ਵਿਦਵਾਨਾਂ ਤੇ ਸਮਝ ਕਿਉਂਕਿ ਉਹ ਉਹ ਵੀ ਵਿਦਵਾਨ ਫਿਰ ਡਿਸਾਈਡ ਉਹ ਜਿਹੜੀ ਗੱਲ ਤੁਸੀਂ ਆਖਦਾ ਹੋ ਇਹ ਨੇ ਜਿਹੜੀ ਆਪਣਾ ਡੁਪਲੀਕੇਟ ਬਣਾਗੇ ਉਹ ਡੁਪਲੀਕੇਟ ਦੇਖਣੀ ਜਿਹੜੀ ਬਣਾਈਆ ਉਹੀ ਲੈ ਬੈਠੇ ਨੇ ਸਮਝ ਕਿ ਤੁਹਾਨੂੰ ਬ੍ਰਹਮਾ ਅਦਾ ਬ੍ਰਹਮਾ ਬ੍ਰਮਾ ਜਿਹੜਾ ਬ੍ਰਹਮ ਜਾਣੇ ਸੇ ਬ੍ਰਹਮਾ ਬ੍ਰਹਮਾ ਨੇ ਬ੍ਰਹਮ ਨੂੰ ਜਾਣੇ ਜੇ ਪੈਦਾ ਹੋਇਆ ਹੈ ਬ੍ਰਹਮ ਤੋਂ ਜਾਣੇ ਆਪਣਾ ਮੂਲ ਪਿਛਾੜੇ ਬੱਬਾ ਬ੍ਰਹਮ ਨੂੰ ਜਾਣ ਤਾ ਸਿਰ ਆਤਮਾ ਬ੍ਰਹਮ ਦੇ ਵੀ ਪਰੇ ਕੋਣੋ ਕਿਹਾ ਬ੍ਰਹਮ ਉੜੂ ਬ੍ਰਹਮ ਉੜ ਬ੍ਰਹਮ ਚਾਰਜ ਬ੍ਰਹਮ ਬ੍ਰਹਮ ਹੋ ਗਿਆ ਬ੍ਰਹਮ ਬ੍ਰਹਮ ਬ੍ਰਹਮ ਬ੍ਰਹਮ ਪੂਰਾ ਬ੍ਰਹਮ ਬ੍ਰਹਮ ਦੋਇ ਜੰਮ ਕੇ ਹੋ ਗਏ ਫੇਰੂਪਰ ਬ੍ਰਹਮ ਮਾਰਮ ਨਮ ਪ੍ਰਵੇਸ਼ਾ ਦਾ ਨਾ ਨਿਕਾਇਓ ਪੂਰਨ ਨਮ ਸਾਬ ਤੇ ਜਿਹੜਾ ਹੋ ਗਿਆ ਨਾ ਉਹ ਪੂਰਨ ਬ੍ਰह्म ਪਰਮ ਨਮ ਕਿਹਾ ਸੀ ਉੱਥੇ ਭਈ ਜੇ ਬ੍ਰह्म ਹੀ ਸਭ ਕੁਝ ਹੈ ਉਹ ਇਹਨਾਂ ਲੱਗ ਸਕਦਾ ਇੱਥੋਂ ਜੋ ਕੀਤਾ ਸੀ ਉਹ ਨਾ ਨਾ ਉਹ ਚਲ ਜਬਰਦੀ ਜਬਰਦੀ ਆ ਇੱਕ ਤੋ ਜਮਾਈ ਜਬਰਦੀ ਉਹ ਇਥੋਂ ਜਪ ਕੀਤਾ ਤੁਸੀਂ ਉਹ ਕਹਿੰਦਾ ਹੈ ਹਰ ਬੁਰੀ ਠੀਕ ਹੈ ਸੀ ਬ੍ਰਹਮਲੀਨ ਬ੍ਰਹਮਾ ਪ੍ਰਭੂ ਨੂੰ ਕੋਸ ਬਿਧਨ ਜਿਹੜਾ ਬ੍ਰਹਮलीन ਹੋ ਗਏ ਜਿਹੜੇ ਪ੍ਰਭਾ ਨੂੰ ਆਦਮੀ ਨੂੰ ਬ੍ਰਹਮਾ ਬੜਾ ਗਿਆ ਜੋ ਪਾਇਆ ਉਹ ਫਿਰ ਇਹਨੇ ਪੈਦਾ ਕੀਤਾ ਪ੍ਰਭਾ ਨੂੰ ਹੋਣ ਉਹ ਦਾ ਸੰਪੂਰਨ ਤੁਸੀਂ ਕਹਣਾ ਬ੍ਰਹਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਇਹਨੇ ਪ੍ਰਭਾ ਪੈਦਾ ਕੀਤਾ ਉਹ ਕਹਿੰਦਾ ਬ੍ਰਹਮਾ ਬੜਾ ਬ੍ਰਹਮਾ ਬੜਾ ਇੱਥੇ ਕਿਹਾ ਇਹ ਕਿਹਾ ये कहा गया कि ये ब्रूपृष्ठ ब्रह्मा ही सब कुछ है या ब्रह्म ही सब कुछ है ब्रह्म ब्रह्मद को समझ लो ता ये ना बोल ब्रूपृष्ठ बोला जाता है अधूरा जीव है वैसे सब करना था ब्रह्म जीव वो कहता ब्रह्म जीव है तो अगली ठीक है, जीव है। था निया। था निया। था निया। मैं जीव ब्रह्म हूं भी जीव ਰਬਤਾਇਆ ਜੀਵੇ ਪੁੱਤ ਇਹ ਤੋਂ ਜਦੋਂ ਦਾ ਪੂਰਨ ਬ੍ਰਹਮਤ ਨਾ ਕਿਹਾ ਲੋਕ ਇਹ ਤੋਂ ਵਾਰ ਉਹ ਹੋਏ ਸਾਰੇ ਸਦ ਅਥਰ ਕਪਲੇ ਕੱਖ ਨਾ ਰਿਆ ਪੱਲੇ ਕੱਖ ਨਾ ਰਿਆ ਜਿੱਦਣ ਤੁਸੀਂ ਬ੍ਰਹਮਾ ਦੇ ਸਭ ਕੁਝ ਬੰਲਿਆ ਦਰਾਗਰੋਦਲੇ ਤੁਹਾਡੇ ਗਾਇਬ ਹੋ ਗਿਆ ਜੀ ਮੈਂ ਦਸੀ ਜੋ ਉਹ ਨਾਨ ਕਰੇ ਆਹੀ ਗੱਲ ਦਸੀ ਐ ਤੁਮੀ ਜਿਹੜੀ ਆ ਸਾਡੇ ਗੁਰਬਾਣ ਨੂੰ ਪਤਾ ਬਾਹਰਲੇ ਤੇ ਉਹ ਕਹਿੰਦੇ ਇਹਦੇ ਕੋਲ ਬਹੁਤ ਕੁਝ ਲੈ ਲਓ ਉਹ ਲੈ ਉਹ ਸਾਰੇ ਦੇ ਕਰਾਈ ਜਾਂਦੇ ਸੀ ਬਾਏ ਇਹਨੂੰ ਗਿਆ ਤੂੰ ਹੀ ਕਰੀ ਜਾਂਦਾ 100 ਹਾਂ ਆਪੇ ਦਿਆਣੋ ਰਾਬਤੇ ਦੱਸ ਦੋ ਕੀ ਬਣ ਆ ਪਿਆ ਵੀ